ਸਤਿਗੁਰ ਦਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਹ ਕੀ ਰੱਛਾ ਹਮਨੈ ਹਾਂਜੀ ਬਲੋ ਦੀਰਸ ਹੈ ਅੱਛਾ ਜਦੋਂ ਵੀ ਕੋਈ ਘਟੌਂਦੀ ਹੈ ਨਾ ਪਾਣੀ ਜੀਰਾਪਾ ਗੁਰਬਾਣੀ ਦੇ ਤੁਲਬ ਲਈਏ ਉੱਥੇ ਪਾਤਸ਼ਾਹੀ ਦਸਵੀਂ ਆਉਂਦਾ ਜਿਹੜੇ ਹੋਰ ਜਿਹੜੇ ਤਨਤਰੀ ਚਰਤਰ ਉਥੇ 10 ਪਾਸ਼ਾ ਦੇ ਜਿਹੜੇ ਕੱਲ ਆਪਾਂ ਨੇ ਉਹ ਕੀਤਾ ਪਗਾਲ ਉਸ ਤੋ 24 ਉਤਾਰਨ ਦੇ ਬੁੱਢ ਉਹ ਉਤਾਰਨ ਦੇ ਬੁੱਢ ਉਥੇ ਪਾਸ਼ਾ ਹੀ 10 ਅੱਗੇ ਕਿਤੇ ਪਾਸ਼ਾ ਹੀ 10 ਕੋਈ ਜਿੱਥੇ ਦੁਨੀਆ ਵੀ ਦਾ ਕੋਈ ਸਾਖੀ ਕਹੜੀਏ ਉਥੇ ਪਾਸ਼ਾ ਹੀ ਨਹੀਂ ਲਿਖਦੇ ਆਪਣੇ ਆਪ ਨੂੰ ਜਨਰਲ ਰਾਈਟਰ ਲਿਖਦੇ ਜੀ ਉਥੇ ਆ ਕੇ ਸ਼ਾਮ ਲਫਜ਼ ਵਰਤਿਆ ਜਾਂਦਾ। ਉਥੇ ਆ ਕੇ ਰਾਮ ਲਫਜ਼ ਵਰਤਿਆ ਜਾਂਦਾ। ਨਾ ਸ਼ਾਮ, ਪੂਰਾ ਨਾ ਰਾਮ ਪੂਰਾ। ਕੁਕੇ ਰਾਮ ਸ਼ਾਮ ਤਾਂ ਦੋਏ। ਅੰਦਰ ਰਾਮ ਬੋਲਦਾ। ਬਾਹਰ ਸ਼ਾਮ ਬੋਲਦਾ। ਮਨ ਸ਼ਾਮ ਹੈ। ਜਿਤਰਾ ਆਉਂਦਾ। ਇਹ ਦੋਏ ਰੜ ਕੇ ਕੁੱਦਦਾ। ਜਦੋਂ ਦੁਨਿਆਵੀ ਸੱਚ ਦੀ ਗੱਲ ਕਰਦੇ ਨੇ ਦੁਨਿਆਵੀ ਸੱਚ ਹੁੰਦਾ ਇੱਕ। ਦਰਾਕਾਰੇ ਸੱਚ ਨੂੰ ਮਿਲਦੀ ਜੁਲਦੀ ਜਗ੍ਹਾ ਲੈ ਸਿੱਖਿਆ ਜਿਹੜੀ ਤੇ ਸੱਚ ਦੀ ਸਿੱਖਿਆ ਸੰਸਾਰ ਦੇ ਵਿੱਚ ਬਿਦਰਦ ਹੁੰਦੇ ਨੇ ਲੋਕ ਤੁਰਕੀ ਵਾਲੀ ਦੇ ਤੁਰ ਲਗ ਲੈ ਹੋਈ ਤੁਰ ਉਤੇ ਰਾਮ ਵਰਤ ਲੈ ਦੇ ਰਫ ਨਹੀਂ ਸ਼ਾਮ ਵਰਤ ਲੈ ਦੇ ਬਸ ਹੋਰ ਕੁਝ ਨਹੀਂ ਹੈ ਇਹ ਕੋਈ ਆਦਮੀ ਦੇ ਦੋ ਦੋ ਜਿਵੇਂ ਕੁਰਬਾਨੀ ਰਾਮ ਔਰ ਸ਼ਾਮ ਭਗਤੀ ਹੈ ਜਿਹੜੀ ਕੁਰਬਾਨੀ ਹੈ ਰਾਮ ਸ਼ਾਮ ਦੀ ਇਕੱਠੀ ਭਗਤੀ ਹੈ ਨਾਰਾਇਣ ਨਾਰਾਇਣ ਦਾ ਉਤਾਰ ਵੀ ਇੱਕੋ ਹੀ ਹੈ ਇੱਥੇ ਨਾਰੋ ਨਾਰਾਇਣ ਦਾ ਉਤਾਰ ਆਊਗਾ ਇਹਦੇ ਵਿੱਚ ਤਸਪੁਰੰਥ ਚ ਉਤਾਰ ਇੱਕ ਆਦਮੀ ਰੋਣ ਨਾਰੋ ਨਾਰਾਇਣ ਨਾਰੋ ਹੋਇਆ ਇਹਨੇ ਜਨਮ ਲਿਆ ਸੀ ਗਰਭ ਚ ਸਰੀਰ ਚ ਨਾਰਾਇਣ ਹੋਇਆ ਇਹਦੇ ਪਿੱਛੇ ਸਾਲੇ ਦੋਹਾਂ ਦਾ ਉਤਾਰ ਇੱਕੋ ਹੀ ਹੁਣ ਦੋਹਾਂ ਨੇ ਕੋਣ ਨੇ ਨਰਵੀਅਤਾ ਨਾਰਾਇਣ ਵਿਅਦਾ ਦੋਏ ਰਲ ਕੇ ਕੋਣ ਨੇ ਫਿਰ ਉਤਾਰ ਹੋਣਾ ਜਿਹੜਾ ਉਤਾਰ ਵੀ ਹੈ ਇਹ ਇਹ ਵੀ ਅਲਸਾ ਉਤਾਰ ਕਹਿੰਦੇ ਨੇ ਉਹ ਜਿਹੜਾ ਸੱਚ ਕਰਨ ਦੀ ਆਵਾਜ਼ ਹੈ ਉਹਦੇ ਵਿੱਚ ਜਿੰਨੀਆਂ ਵੀ ਆਵਾਜ਼ਾਂ ਨੇ ਕੱਲੇ-ਕੱਲੇ ਦੀਆਂ ਕੱਲੇ ਵੀ ਆਵਾਜ਼ ਨੂੰ ਅਲਸਾ ਉਤਾਰ ਕਹਾਂਗੇ ਹੈ ਕੋਈ ਆਵਾਜ਼ ਉਹਦੇ ਵਿੱਚ ਮਿਕਸ ਹੈ ਪਰ ਜੇ ਕੱਲੇ ਦਾ ਨੂੰ ਲਵਾਂਗੇ ਨਾ ਕੋਈ ਨਾਰਕ ਕੱਲੇ ਜੇ ਆਪਾਂ ਗੱਲ ਕਰੀਏ ਆਵਾਜ਼ ਵਿੱਚ ਹੁਕਮ ਦੇ ਰਾਂ ਰੱਖਦੀ ਪਰ ਉਹ ਅੰਸਾਵਤਾਰ ਉਹ ਪੂਰੀ ਆਵਾਜ਼ ਦਾ ਪੂਰੇ ਸੱਚ ਖੜ ਦਾ ਇੱਕ ਅੰਸ਼ ਹੈ ਜਿਵੇਂ ਬੂੰਦ ਇੱਕ ਸਮੁੰਦਰ ਦਾ ਅੰਸ਼ ਹੁੰਦੀ ਹੈ। ਉਹ ਬੂੰਦਾਂ ਨਾਲ ਕਹਿੰਦਾ ਸਮੁੰਦਰ ਬਣੇ। ਬੂੰਦਾਂ ਨਾਲ ਕੇ ਸਮੁੰਦਰ ਬਣੇ। ਉਹ ਅੰਸਾਵਤਾਰ ਵੀ ਇਹੇ ਚ ਆਊਗਾ ਹੁਣ ਅੰਸਾਵਤਾਰ ਵੀ ਗਾਊਗਾ। ਅੰਸਾਵਤਾਰ ਦਾ ਇਹ ਦੋਨੇ ਅਰਥ ਇਹਨਾਂ ਨੇ ਵਿਦਵਾਨਾਂ ਨੇ ਕੁਝ ਹੋਰੇ ਰੱਖਿਆ ਹੋਇਆ। ਚਲੋ ਜੋ ਮਰਜੀ ਰੱਖਣ। ਜੇ ਇਹਨਾਂ ਨੂੰ ਠੀਕ ਕਰਤਾ ਦਾ ਪਤਾ ਹੁੰਦਾ ਫਿਰ ਲੱਭ ਨਾ ਲੈਂਦੇ ਸੱਚ ਨੂੰ ਇੱਥੋਂ ਹੀ ਦਾ ਗੱਲ ਪਾਸ਼ਾ ਦੀ ਅਰਥਾਂ ਤੋਂ ਹੀ ਦਿਸ਼ਾ ਬਦਲ ਜਾਂਦੀ ਹੁੰਦੀ ਹੈ ਪਾਸ਼ਾ ਦੇ ਅਰਥ ਠੀਕ ਨਹੀਂ ਤੁਹਾਡੇ ਕੋਲ ਉਹਦਾ ਗਿਆਨ ਠੀਕ ਨਹੀਂ ਹੁੰਦਾ ਗਿਆਨ ਠੀਕ ਨਹੀਂ ਹੁੰਦਾ ਲੈ ਠੀਕ ਨਹੀਂ ਹੋਣੀ ਸਮਝ ਠੀਕ ਨਹੀਂ ਹੋਣੀ ਹਰੇ ਹੁਣ ਇਹ ਹੈ ਅਕਾਲ ਉਸਤ ਅਕਾਲ ਕੌਣ ਹੈ ਕਾਲ ਅਕਾਲ ਖਸਮ ਕਾ ਕੀਆ ਇਹ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਲ ਜੜਨ ਹੋਕਬੇ ਕੋ ਜਬੜ ਬਰ ਨਾ ਹੋਕਬੇ ਨੋ ਕਾਲ ਅਕਾਲ ਖਸਮ ਕਾ ਕੀਆ ਇਹ ਅਕਾਲ ਜੜਾ ਖਸਮ ਇਹ ਉਹਦੀ ਵਡਿਆਈ ਉਹਦੀ ਉਸਤਤਿ ਹੁਕਮਤੋਂ ਪਿੱਛੇ ਖੜਾ ਹੈ ਹੁਕਮ ਨੇ ਪੈਰਾਂ ਕੀਤਾ ਹੈ ਇਹ ਹਮੇਸ਼ਾ ਰਹਿੰਦਾ ਉਹ ਕਮ ਉਹ ਹਮੇਸ਼ਾ ਨਹੀਂ ਰਹਿੰਦਾ ਉਹ ਕਮ ਪ੍ਰਗਟ ਹੁੰਦਾ ਰਹਿੰਦਾ ਗੁਪਤ ਹੁੰਦਾ ਰਹਿੰਦਾ ਕੋਈ ਵੀ ਹਾਕਮ ਹਮੇਸ਼ਾ ਹੀ ਤਾਂ ਹੁਕਮ ਨਹੀਂ ਕਰਦਾ ਰਹਿੰਦਾ ਲੋਹ ਸੰਸਾਰ ਦੇ ਵਿੱਚ ਇੱਥੇ ਤਾਂ ਇਹ ਹਾਕਮ ਦਾ ਹਮੇਸ਼ਾ ਹੁਕਮ ਕਰਦਾ ਕਿਉਂਕਿ ਇੱਥੇ ਬਹੁਤ ਦੂਰ ਤੱਕ ਫਸਾਰਿਆ ਨਾ ਸ੍ਰਿਸ਼ਟੀ ਦਾ ਇਹਦੀ ਜ਼ਿੰਮੇਵਾਰੀ ਬਹੁਤ ਹੈ ਨਾ ਇਹ ਤਾਂ ਹਮੇਸ਼ਾ ਹੀ ਬੋਲਦਾ ਰਹਿੰਦਾ ਹੁਕਮ ਕਰਦਾ ਹੀ ਰਹਿੰਦਾ ਪਰ ਜਨਰਲੀ ਹਾਕਮ ਉਹក៏ ਵੇਸ਼ਾ ਨਹੀਂ ਕਰਦੇ ਇਹਨੂੰ ਵੇਸ਼ਾ ਕਰਨਾ ਪੈਂਦਾ ਕਿ ਜਦਨੇ ਵਰਦੇ ਹਮੇਸ਼ਾ ਹੀ ਰਹਦੇ ਨੇ ਹਮੇਸ਼ਾ ਹੀ ਭੁੱਖ ਲੱਗਦੀ ਹੈ ਲੋੜਾਂ ਦੇ ਹਮੇਸ਼ਾ ਹੀ ਇਹ ਹੁਕਮ ਚੱਲਦਾ ਰਹਿੰਦਾ ਪਰ ਜਿੰਨਾ ਜਨ ਸ੍ਰਿਸ਼ਟੀ ਹੈ ਉਹਨਾਂ ਜਿਹੜਾ ਚੱਲਦਾ ਹੈ ਸ੍ਰਿਸ਼ਟੀ ਨਹੀਂ ਹੁੰਦੀ ਫਿਰ ਹੁਕਮ ਬੰਦ ਹੋ ਜਾਂਦਾ ਚੰਦ ਸੂਰਜ ਵੀ ਇਹਨੇ ਹੁਕਮ ਦੇ ਵਿੱਚ ਨੇ ਪੌਣ ਪਾਣੀ ਵੀ ਹੁਕਮ ਦੇ ਵਿੱਚ ਰੱਖਲੇ ਨੇ ਸਾਰੇ ਜੀਵ ਵੀ ਹੁਕਮ ਦੇ ਵਿੱਚ ਨੇ ਸਮਝ ਨਹੀਂ ਤੇ ਉਹਨੂੰ ਤਾਂ ਸਦਾ ਹੀ ਬੋਲਣਾ ਪੈਣਾ ਸਦਾ ਜਾਗਦੇ ਹੀ ਰਹਿਣਾ ਪੈਣਾ ਪਰ ਜਦੋਂ ਰਚਨਾ ਹੁੰਦੀ ਹੋਣੀ ਫਿਰ ਹੁਕਮ ਦੀ ਲੋੜ ਹੀ ਨਹੀਂ ਹੁੰਦੀ ਅਕਾਲ ਉਦੋਂ ਵੀ ਹੁੰਦਾ ਹੈ ਅਕਾਲ ਦੀ ਹੋਂਦ ਉਦੋਂ ਦੀ ਹੈ ਸਮਝਾ ਨਹੀਂ ਇਹਦੀ ਹੋਂਦ ਉਦੋਂ ਦੀ ਇਹ ਕੀ ਹੈ ਉਦੋਂ ਕੀ ਹੁੰਦਾ ਸੁੱਧ ਨੂੰ ਲਗਾਏ ਦਾ ਅਕਾਲ ਸੁਧ ਸੁਬਾਦ ਲਗਾਇਆ ਜਾਂਦਾ ਹੁੰਦਾ ਯਾ ਹੁਕਮ ਬੈਡਾ ਕਰ ਲੈਂਦਾ ਇਹ ਸ੍ਰੀ ਸ੍ਰੀ ਰਚ ਲੰਦਾ ਫਿਰ ਸਹਜ ਸਮਾਦ ਚ ਹੋ ਜਾਂਦਾ ਸਹਜ ਸਮਾਦ ਸਹਜ ਅਵਸਥਾ ਚ ਹੋ ਜਾਂਦਾ ਸਹਜ ਅਵਸਥਾ ਸਮਾਦ ਉਹਦਾਂ ਟਿਕਿਆ ਹੋਇਆ ਸਮਾਦ ਉਹਦਾਂ ਟਿਕਿਆ ਹੋਇਆ ਟਿਕਿਆ ਹੋਇਆ ਫਿਰ ਵੀ ਆ ਪਰ ਸਹਜ ਅਵਸਥਾ ਚ ਪਰਪੁਕਾਰ ਦੀ ਬੁਧਰਾ ਚ ਪਰਪੁਕਾਰ ਦੀ ਬੁਧਰਾ ਚ ਆਪਣਾ ਹੈ ਤਾਂ ਕੋਈ ਨਹੀਂ ਪਰਪੁਕਾਰ ਦਾ ਹੈ ਰੁਦਰ ਪਰਪੁਕਾਰ ਵਾਸਤੇ ਜੀਵਾਂ ਦੀ ਜਿਹੜੇ ਅੱਜ ਕਮਜ਼ੋਰੀ ਪੈ ਗਈ ਉਹਨਾਂ ਦੀ ਭਲਾਈ ਵਾਸਤੇ ਡਿਵੈਲਪਮੈਂਟ ਵਾਸਤੇ ਸਹਿਜ ਸਮਾਧ है, ਸਹਿਜ ਸਮਾਧ ਹੋਊ ਤੇ ਚਿੰਤਾ ਵੀ ਹੋਊ ਸੋਨ ਨਸਵਾ ਚਿੰਤਾ ਹੁੰਦੀ ਸਾਸਵਾ ਚਿੰਤਾ ਹੁੰਦੀ ਇਸ ਕਰਕੇ ਗਏ ਸਰਬ ਕੀ ਚਿੰਤਾ ਜਿਸ ਮਨ ਮਾਹਨ ਕਿਦੇ ਮਨ ਮਾਹ ਆ ਗਾਲ ਜਿਹੜੇ ਇਹਦੇ ਬੋਲ ਚੇ ਸਾਰੇ ਨਤੀਜੇ ਦਾ ਕਿ ਜੁਬੇ ਵਾਰੀਏ ਨੋ ਸਾਰੇ ਰਚਨਾਂ ਦੀ ਚਾਹਦਾ ਸੂਰਜ ਨੂੰ ਪੈਸੇ ਚਲਾਉਣੇ ਸਾਰੇ ਨੂੰ ਖਾਣ ਨੂੰ ਦੇਣਾ ਜਿਹੜੇ ਪੈਦਾ ਕਰਦੇ ਉਹ ਧਿਆਨ ਵੀ ਰੱਖ ਧਿਆਨ ਰੱਖਣ ਵਾਲੇ ਦੇ ਅੰਦਰ ਚਿੰਤਾ ਦੁੰਦੀ ਹੈ। ਜਾਗਦਾ ਰਹਿਣਾ ਧਿਆਨ ਦੇ ਵਿੱਚ ਸਭ ਨੂੰ ਰੱਖਣਾ ਸਭ ਨੂੰ ਧਿਆਨ 'ਚ ਚਲਾਉਣਾ। ਇਸ ਐਸੀ ਕੋਈ ਜਿੰਦਗੀ ਨਹੀਂ ਹੈ ਜਿਹੜੀ ਇਹਦੇ ਵਾਸਤੇ ਬਾਹਰ ਹੋਵੇ। ਐਸਾ ਕੋਈ ਕੰਮ ਨਹੀਂ ਜਿਹੜਾ ਵਾਸਤੇ ਬਾਹਰ ਹੋਵੇ। ਫਿਰ ਵੀ ਚਿੰਤਾ ਕਰਦੇ। ਚਿੰਤਾ ਕਰਕੇ ਹੀ ਤਾਂ ਹਰ ਵਕਤ ਜਾਗਦਾ ਰਹਿਣਾ ਸਭ ਨੂੰ। ਇਕ ਅਕਾਲ ਅਕਾਲ ਵਾਰੀ ਅਸੀਂ ਜਾਣਕਾਰੀ ਲਈਏ ਪਹਿਲਾਂ ਅਕਾਲ ਇਹਦੀ ਹਸਤਤਾ ਅੱਜ ਜਿਹੜਾ ਚੈਪਟਰ ਚੱਲੂਗਾ ਇਹ ਪ੍ਰਖਵਾਜਿਕ ਜਾਊਗਾ ਇਹ ਚੈਪਟਰ ਇਹਦੇ ਵਿੱਚ ਇੱਕ ਤਰ ਪੰਗੀ ਆਊਗਾ ਇਹਦੇ ਵਿੱਚੇ ਹੋਊਗਾ ਹੋ ਕੀ ਆਊਗਾ ਉਹ ਇਹਦੇ ਹੁਕਮ ਦੀ ਹਸਤਤੀ ਹੈ ਉਹ ਬਾਦ ਆ ਰੂਪ ਦੀ ਹਸਤਤੀ ਹੈ ਇਹ ਪ੍ਰਖ ਰੂਪ ਦੀ ਹਸਤਤੀ ਹੈ ਕਿ ਕਿ ਸ੍ਰਿਸ਼ਟੀ ਜਿਹਾ ਜਨਮ ਲੂ। ਇਹ ਕਰਦਾ ਆਪਣੇ ਹੁਕਮ ਕੰਮ ਸਾਰਾ ਇਹਦੇ ਗੁਣ ਪ੍ਰਗਟ ਕਰਨ ਹੁੰਦੇ ਨੇ। ਹੁਕਮ ਦੇ ਧਰੂ ਇਹਦੇ ਗੁਣ ਪ੍ਰਗਟ ਹੁੰਦੇ ਨੇ। ਅਕਾਲ ਨਰਗੁਣ। ਅਕਾਲ ਨਰਗੁਣ। ਹੁਕਮ ਦੇ ذریعے ਤੁਰਕੀ ਬਾਣੀ ਦੇ ذریعے ਇਹਦੀ ਸਾਰੀਆਂ ਪਾਵਨ ਪ੍ਰਗਟ ਹੁੰਦੀਆਂ ਸੰਸਾਰ ਦੇ ਸਾਹਮਣੇ। ਇਹ ਆਪਣੇ ਆਪ ਨੂੰ ਪ੍ਰਗਟ ਕਿਵੇਂ ਕਰਦਾ? ਉਹ ਕਮ ਦੇ ਥਰੂ ਕਰਦਾ ਪ੍ਰਗਟ ਆਪਣੇ ਭਾਣੇ ਦੇ ਭਾਣੇ ਦੇ ਥਰੂ ਕਰਦਾ ਇੱਛਾ ਦੇ ਥਰੂ ਕਰਦਾ ਪ੍ਰਗਟ ਆਦਮੀ ਦੀ ਇੱਛਾ ਦੇ ਆਦਮੀ ਦਾ ਪਤਾ ਲੱਗਦਾ ਜੀ ਇੱਛਾ ਕਹੇ ਜੀ ਕਿਸੇ ਦੀ ਇੱਛਾ ਬੁਰੀ ਹੈ ਕਿਸੇ ਦੀ ਇੱਛਾ ਚੰਗੀ ਹੈ ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ ਕਿਸੇ ਦੀ ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ ਨਹੀਂ ਜਿੱਦੀ ਦੂਸਰੇ ਹੱਥਾਂ ਦੀ ਚਾਹ ਹੋ ਗੁਣ ਨੇ ਜਿੱਦੀ ਹੈਰੀ ਉਹ ਗੁਣ ਇਹਦੇ ਸਾਰੇ ਗੁਣੇ ਗੁਣ ਨੇ ਚੋਗੜ ਕੋਈ ਸਗੀ ਨਹੀਂ ਅੱਜ ਵੀ ਚੋਗੜ ਹੈ ਗੁੜ ਵੀ ਹੈ ਸਾਡੇ ਚ ਗੁੜ ਵੀ ਨਹੀਂ ਉਹ ਵੀ ਕਿਸੇ ਚੋਗੜ ਜ਼ਿਆਦਾ ਹੈ ਕਿਸੇ ਗੁੜ ਜ਼ਿਆਦਾ ਨਹੀਂ ਤਾਂ ਗੱਲ ਅਲੱਗ ਹੈ ਨਾ ਪਰ ਇਹ ਚੋਗੜ ਕੋਈ ਨਹੀਂ ਕੋਈ ਤਾਂ ਸਰੀਰ ਹੈ ਨਹੀਂ ਉਹ ਸਰੀਰ ਕਰਕੇ ਨਹੀਂ ਸਾਡੇ ਨੂੰ ਕੋ ਲੋੜ ਹੈ ਨਹੀਂ ਸਾਡੀਆਂ ਲੋੜਾਂ ਆਇਆ ਦੀ ਹੋ ਗਿਆ ਖੁਦ ਪੈਦਾ ਕਰਦੀ है ਬੈਰਵਰੋਦ ਹੈ ਦੀ ਜਦ ਕਹੇ ਚੀ ਤਾਂ ਕੋਈ ਕਬਜ਼ਾਈ ਨਹੀਂ ਕਰਨਾ ਬੈਰਵਰੋਦ ਲਗਾਦਾ ਹੁਣ ਬੈਰਵਰੋਦ ਤਾਂ ਤਾਹੀ ਹੈ ਨਾ ਕੋਈ ਸਾਡੇ कोई ਹੈ ਕੁਛ 1 1 ਕੜ ਇਹਦੇ ਵਿੱਚ ਹੀ ਉਹ ਜਿਹੜਾ ਤਰਪੰਗੀ ਸੰਦ ਆਊਗਾ 20 ਪੱਧਰ ਉਹਦੇ ਉਹਨਾਂ ਨੇ ਕਹਾਣੀ ਬਣਾਈ ਹੋਈ ਆ ਬਿਦਵਾਨਾਂ ਨੂੰ ਕੀ ਪਤਾ ਕਿਉਂ ਆਇਆ ਆਉਣੇ ਸੀ ਵਿੱਚ ਕਿਉਂਕਿ ਇਹ ਸੰਸਾਰ ਚੱਲੂ ਹੈ ਜਿਹੜਾ ਬੋਲ ਰਿਹਾ ਹੈ ਜਿਹੜਾ ਲਿਖਾ ਰਿਹਾ ਲਿਖ ਰਿਹਾ ਹੈ ਦੋ ਸਰਬਾਸ਼ਾ ਉਹ ਆਪੇ ਭਗਉਤੀ ਰੂਪ ਹੈ ਉਹ ਨਤਰ ਭੰਗੀ ਨਾ ਉਹ ਆਪੇ ਭਗਉਤੀ ਹੈ ਭਗਉਤੀ ਕੌਣ ਹੁੰਦਾ ਭਗਤ ਆਪੋ ਭਗਤ ਨੂੰ ਇਹ ਭਗਉਤੀ ਕਹਿੰਦੇ ਨੇ ਭਗਉਤੀ ਭਗਉਤੀ ਭਗਵਾਨ ਤੇ ਭਗਤ ਕਰਾਂਗੇ ਤੇ ਸੁਭਗੋਤੀ ਕੀ ਮਤ ਉੱਤਮ ਹੋਏ ਮਤਗੀ ਦੀ ਨਾਨਕ ਦੀ ਜੇ ਮੱਤ ਹੈ ਅਸੀਂ ਕਹਿੰਦੇ ਹ ਗੁਰੂਆਂ ਦੀ ਮੱਤ ਹੈ ਗੁਰਮਤ ਹੈ ਜਿੰਨੇ ਆ ਦੀ ਮੱਤ ਹੈ ਗੁਰੂ ਗ੍ਰੰਥ ਸਾਹਿਬ ਸਾਰੇ ਭਗੋਤੀ ਨੇ ਜਿਨ੍ਹਾਂ ਨੇ ਮੰਨ ਜਿੱਤੇ ਭਗੋਤੀ ਨਾਲੇ ਜਿੱਤੇ ਵੰਤਨ ਨਾਲੇ ਆਪਣੀ ਨੂੰ ਗਾਨ ਘੜਗਲਾ ਮਨ ਸੂਲੂ ਜਾ ਉਹੀ ਤਾਂ ਬਗੋਤੀ ਹੈ ਯਾਨੀ ਇਹਦਾ ਹੋ ਗਿਆ ਅਕਾਲ ਜਿਹੜਾ ਸੰਸਾਰ ਦੇ ਵਿੱਚ ਆਖਾਲ ਹੈ ਜਿਹਨੇ ਜੰਮਣ ਮਨ ਤੋਂ ਪਰੇ ਚਲੇ ਉਹ ਵੀ ਤਾਂ ਖਾਲੇ ਹੋ ਗਿਆ ਸੰਸਾਰ ਹੀ ਨੇ ਕਾਲ ਜਿਤਲੇ ਉਹ ਵੀ ਅਕਾਲ ਹੋ ਗਿਆ ਅਕਾਲ ਮੁਰਤੀ ਉਹ ਵੀ ਅਕਾਲ ਹੋ ਗਿਆ ਇਹੇ ਜਾਈ ਹੋ ਗਿਆ ਪਰ ਉਹ ਸੰਸਾਰ ਜਿਹਦੇ ਹੈਗਾ ਇਹਦੇ ਪਰਥਾਏ ਕੰਮ ਕਰ ਰਿਹਾ ਉਹ ਅਕਾਲ ਦੇ ਪਰਥਾਏ ਕਰ ਰਿਹਾ ਜਿਹੜੀ ਇਹ ਸੋਈ ਭਗੋਤੀ ਨਾਮ ਕਹਈ ਹੈ ਨਾ ਉਹ ਭਗੋਤੀ ਅਕਾਲ ਦੇ ਪਰਥਾਏ ਕੰਮ ਕਰ ਰਹੀ ਹੈ ਜੋ ਕਰ ਰਹੀ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਸਾਰਿਆਂ ਦੀ ਸਾਂਝੀ ਹੁੰਦੀ ਹੈ ਇਹ ਗੁਰਬਤ ਸਭ ਦੀ ਸਾਂਝੀ ਹੈ ਸਾਰੇ ਜਹਾਨ ਦੀ ਹੋ ਸਾਂਝੀ ਪਰਥਾਏ ਕਭ ਕਰਦੇ ਨੇ ਅਕਾਲ ਪੁਰਖ ਦੇ ਪਰਥਾਏ ਉਹਦੀ ਆਵਾਜ਼ ਨੂੰ ਸਾਡੇ ਸੇ ਸੁਣਾ ਰਹੇ ਨੇ ਅਕਾਲ ਦੀ ਮੂਰਤੀ ਹੈ ਉਹ ਅਕਾਲ ਦੀ ਮੂਰਤ ਨੇ ਪਰ ਮੂਰਤ ਆਤਮਾ ਕਰਕੇ ਨਹੀਂ ਸਰੀਰ ਕਰਕੇ ਨਹੀਂ ਖੜੋ ਬਸ ਇੱਥੋਂ ਫਰਕ ਬੁੱਧ ਔਰ ਗਿਆਨ ਕਰਕੇ ਦਾ ਮੂਰਤ ਨੇ ਅਕਾਲ ਦੀ ਸਰੀਰ ਕਰਕੇ ਨਹੀਂ ਬਸ ਲੋਕਾਂ ਅਸੀਂ ਦੁਨੀਆ ਦੇ ਲੋਕ ਸਰੀਰ ਕਰਕੇ ਜਾਂ ਬੋਲ ਲੈਣੇ ਇੱਥੋਂ ਗੱਲ ਖਰਾਬ ਹੁੰਦੀ ਹੈ। ਖਾਲਸਾ ਮੇਰੋ ਕੀ ਹੈ? ਬੁੱਧ ਔਰ ਗਿਆਨ। ਖਾਲਸਾ ਮੇਰੋ ਬੁੱਧ ਔਰ ਗਿਆਨ ਦੇਖੋ ਘੜੀ ਅੱਖਾਂ ਨਾਲ ਦੇਖੂਗੇ ਉਹਨੂੰ। ਬੁੱਧ ਔਰ ਗਿਆਨ ਨੂੰ ਦੇਖੋ ਘੜੀ ਅੱਖਾਂ ਦੇਖੂਗੇ। ਇਹ ਤੀਸਰੀ ਅੱਖਾਂ ਦੀ ਹੈ। ਬੁੱਧੀ ਦਾ ਦਰਸ਼ਨ ਬੁੱਧੀ ਨਾਲੇ ਹੋਊਗਾ। ਬੁੱਧ ਔਰ ਗਿਆਨ ਦਾ ਦਰਸ਼ਨ ਬੁੱਧੀ ਨਾਲ ਹੋਊਗਾ। ਕਦ ਜਦ ਬੁੱਧੀ ਉਹਨੂੰ ਬੁੱਧੀ ਨੂੰ ਸਮਝ ਲਊਗੀ ਉਸੇ ਬੁੱਧੀ ਨੂੰ ਜਾਂ ਸਮਝ ਲੂ ਨਾ ਬਸ ਫੈਦਰਸ਼ਨ ਹੋ ਜਾਊਗਾ ਜਦ ਲੈਣਾ ਨੇ ਨਾਨਕ ਦੀ ਗੱਲ ਨੂੰ ਫੋਲੋ ਕਰ ਲਿਆ ਸਮਝ ਲਿਆ ਲੈਣਾ ਨਾਨਕ ਬਣ ਗਿਆ ਜਦ ਲੈਣਾ ਨਾਨਕ ਬਣ ਗਿਆ ਉਹਦੀ ਗੱਲ ਨੂੰ ਅਮਰਦਾਸ ਨੇ ਸਮਝ ਲਿਆ ਉਹ ਵੀ ਰੰਗ ਬਣ ਗਿਆ ਸਾਰੇ ਨਾਨਕੇ ਬਣਦੇ ਚਲੇ ਗਏ ਕੋਈ ਮੋਢਾ ਨਹੀਂ ਸਾਰਿਆਂ ਦੀ ਬੁੱਧਰ ਗਿਆਨਿਕ ਹੋ ਗਿਆ ਤੇ ਸਾਰੇ ਖਾ ਕਵੀਰ ਨੇ ਉਹਨੂੰ ਖਾਲਸਾ ਕਹਿਤਾ ਖਾਲਸਾ ਕਾਉਣੇ ਪ੍ਰੇਮ ਭਗਤ ਜਿੰਨ ਜਾਨੀ ਪ੍ਰੇਮ ਭਗਤੀ ਕੀ ਦੀ ਐ ਐ ਦੀ ਉਹ ਦੀ ਐ ਪ੍ਰੇਮ ਭਗਤੀ ਇਹਨੇ ਸਾਨੂੰ ਦੱਸਿਆ ਵੀ ਤੁਸੀਂ ਸਾਰੇ ਮੇਰੀ ਔਲਾਦ ਹੋ ਭਾਈਓ ਤੁਸੀਂ ਲੜਦੇ ਕਹਦੇ ਪਿੱਛੇ ਇਸ ਅਕਾਲ ਦੇ ਮੈਂ ਅਕਾਲ ਪੁਰਖ ਦੀ ਰੱਛਾ ਹਮਨੇ ਅਕਾਲ ਪੁਰਖ ਦੀ ਰੱਛਾ ਹਮਨੇ ਸਰਬ ਲੋਗ ਦੀ ਰੱਛਾ ਹਮਨੇ ਅਕਾਲ ਪੁਰਖ ਦੀ ਰੱਛਾ ਹਮਨੇ ਸਾਨੂੰ ਜਿਹੜਾ ਕਿ ਸਾਰਿਆਂ ਦਾ ਬਾਪ ਹੈ ਉਹਦੇ ਰੱਛਾ ਜੇ ਮੈਂ ਬਾਪ ਨੂੰ ਜਾਂ ਮਾਂ ਨੂੰ ਬੱਚੇ ਦੀ ਚਿੰਤਾ ਹੁੰਦੀ ਹੈ ਛੋਟੇ ਦੀ ਐਵੇਂ ਉਹਦੀ ਚਿੰਤਾ ਸਾਡੀ ਚਿੰਤਾ ਉਹਨੂੰ ਐਸ ਕਰਕੇ ਉਹਦੀ ਰੱਛਿਆ ਕਰਨ ਸਰਬ ਦੀ ਰੱਛਿਆ ਆਪਨੇ ਸਰਬ ਲੋ ਕੀ ਹੈ ਸਰਬ ਲੋ ਆਉਦੇ ਗੋਲ ਬਹੁਵਚਨ ਆਇਆ ਹੋਇਆ ਉਹ ਤਾਂ ਇੱਕァ ਫਿਰ ਸਰਬ ਆਇਆ ਹੋਇਆ ਗੁਲਾਮ ਕਰਕੇ ਜਿਹੜੇ ਉਹਦੇ ਸਾਰੇ ਗੁਲ ਦੇ ਉਹ ਸਾਡੀ ਰੱਖਸ਼ਾ ਵਾਸਤੇ ਹੀ ਲੰਦੇ ਜਿੰਨੇ ਉਹਦੇ ਚ ਗੁਲ ਨੇ ਜਿੰਨੀ ਉਹਦੀ ਐਫਰਟ ਹੈ ਚਾਹੇ ਸਾਨੂੰ ਕਿਸੇ ਬੜੇ ਲੱਗਦੀ ਹੋਵੇ ਵੀ ਇਹ ਐਫਰਟ ਸਾਡੇ ਖਿਲਾਫ ਹੈ ਪਰ ਸਾਡੀ ਰੱਖਸ਼ਾ ਵਾਸਤੇ ਹੀ ਆ ਸੇ ਸਬਜੁਕਤ ਦੀ ਗੱਲ ਗੁਣਾ ਕਰਕੇ ਰੱਖਿਆ ਕਰਦੀਓ ਰੇ ਸੁਨ ਸਵਾਦ ਦੇ ਵਿੱਚ ਰੱਖਿਆ ਕਰ ਨਹੀਂ ਸਕਦਾ ਸਾਇਦ ਸਮਾਦ ਦੇ ਵਿੱਚ ਕੋਣ ਪ੍ਰਗਟ ਹੁੰਦੇ ਨੇ ਗੁਣਾ ਕਰਕੇ ਰੱਖਿਆ ਹੈ ਜੀ ਜਾਂ ਵੀ ਬਾਤਾਰੂਪ ਚ ਤੇ ਗੁਲ ਪ੍ਰਗਟ ਹੁੰਦੇ ਨੇ ਇੱਛਾ ਸ਼ਕਤੀ ਜਿਹੜੀ ਹੈ ਗੁਲ ਇੱਛਾ ਸ਼ਕਤੀ ਬਾਤਾਰੂਪ ਦੇ ਵਿੱਚ ਤੇਰੀ ਇੱਛਾ ਸ਼ਕਤੀ ਹੈ ਜਿਹੜੀ ਤੇਰੇ ਗੁਲ ਉਹਨਾਂ ਦੀ ਰਿਛਾ ਉਹਨਾਂ ਕਰਕੇ ਸਾਡੀ ਰਿਛਾ ਸਰਵ ਕਾਲ ਜੀ ਦੀ ਰੱਛਾ ਹਮਨੇ ਸਰਵ ਕਾਲ ਜੀ ਦੀ ਰੱਛਾ ਹਮਨੇ ਜਿਹੜਾ ਤਿੰਨੇ ਲੋਕਾਂ ਦੇ ਵਿੱਚ ਰਹਿੰਦਾ ਹੈ ਤਦਾ ਸਰਵ ਕਾਲ ਆ ਗਿਆ ਨਾ ਇੱਕ ਕਾਲ ਆ ਇੱਕ ਆ ਗਿਆ ਸਰਵ ਕਾਲ ਲੋਕਾਂ ਦੇ ਵਿੱਚ ਤਿੰਨਾ ਲੋਕਾਂ ਦੇ ਵਿੱਚ ਹੀ ਸਾਡੀ ਰੱਛਾ ਕਰਦਾ ਇਹ ਨਹੀਂ ਵੀ ਹੁੜੇ ਕਰਦਾ ਅੱਜ ਆਦੋਂ ਹੋਣ ਹੈਗੇ ਮਰਦ ਤੋਂ ਬਾਅਦ ਵੀ ਰਛਾ ਹੀ ਕਰਦਾ ਗਰਭ ਵਿੱਚ ਵੀ ਉਹ ਸਾਡੇ ਕੀਤੀ ਹੈ ਹੁਣ ਵੀ ਉਹ ਹੀ ਕਰੇ ਤਿੰਨੇ ਗਾਲਾਂ ਦੇ ਵਿੱਚ ਰਛਾ ਕਰਦਾ ਹੈ ਉਹ ਡਿਊਟੀ ਨਹੀਂ ਬਦਲਦੀ ਉਹ ਫਿਰ ਕਿਸੇ ਦੀ ਹੋਲਦੀ ਡਿਊਟੀ ਹੈ ਜਿਵੇਂ ਜਿਵੇਂ ਇਹਨਾਂ ਆਬੀ ਉਹ ਜਾਂ ਚਲਾ ਜਾਂਦਾ ਨਾ ਕੰਨ ਫਿਰ ਕਿਸੇ ਦੀ ਡਿਊਟੀ ਹੋਰ ਬਦਲ ਜਾਂਦੀ ਹੈ ਫਿਰ ਉੱਥੇ ਉਹ ਦੁੱਖ ਦੇਣ ਵਾਲੇ ਆ ਜਾਂਦੇ ਇਹ ਜੀ ਕੋਈ ਗੱਲ ਨਹੀਂ ਹੈ ਇਹ ਜਾਂ ਕੋਈ ਨਸ਼ਕ ਨਹੀਂ ਹੈਗਾ ਜਿਹੜਾ ਦਿਖਾਇਆ ਹੋਇਆ ਇਹਨਾਂ ਨੇ ਉਹ ਕਰਦਾ ਹੈ ਗਲਤੀ ਕਰਦੇ ਆ ਆਪਣੀਆਂ ਗਲਤੀਆਂ ਦਾ ਦੁੱਖ ਭੋਲਦੇ ਆ ਹੋਰ ਕੁਛ ਨਹੀਂ ਦੁੱਖ assi ਆਪਣੇ ਵਾਸਤੇ ਆਪ ਕ੍ਰੀਏਟ ਕਰਦੇ ਆ ਅਸਲ ਚ ਸੁਖ ਪੈਦਾ ਕਰਦੇ ਆ assi ਉਦੋਂ ਦੁੱਖ ਪੈਦਾ ਹੋ ਜਾਂਦਾ ਆਪਣੀ ਜਾਣੇ ਦਾ ਸੁਖ ਪੈਦਾ ਕਰਦੇ ਆ ਹੋ ਜਾਂਦਾ ਨਹੀਂ ਦੁੱਖ ਸਾਡੀ ਬੇਸਮਝੀ ਨਾਲ ਹੋ ਜਾਂਦਾ ਦੁੱਖ ਪੈਦਾ ਕਰਦੀ ਹੈ ਸਾਡੀ ਆਪਣੀ బుਧ ਸੋਗ ਹੁੰਦਾ ਸਾਨੂੰ ਬਾਹਣੇ ਤੋਂ ਬਾਹਰ ਜਾ ਕੇ ਦੁੱਖ ਹੈ ਉਹਦੇ ਬਾਣੇ ਚ ਰਹਿਣ ਦਾ ਸੁੱਖ ਹੈ ਜਦੋਂ ਅਸੀਂ ਸਾਨੂੰ ਆਪਣੀ ਅਗਲਾਂ ਚੱਲਦੇ ਆ ਆਪਣੇ ਬਾਣੇ ਚੱਲਦੇ ਆ ਫਿਰ ਦੁੱਖ ਹੋਵੇ ਉਹਦੇ ਬਾਣੇ ਚ ਰਹੇ ਕੋਈ ਦੁੱਖ ਨਹੀਂ ਇਹਦਾ ਮਤਲਬ ਦੁੱਖ ਸਾਰੇ ਸਾਡੀ ਆਪਣੀ ਸੋਚੋ ਸਾਨੂੰ ਬਿਲਦ ਆਪਣੀ ਕਬੂਖਲੀ ਤੋਂ ਬੇਖਲੀ ਤੋਂ ਦੁੱਖ ਭਰ ਲੁੱਦ ਦੁੱਖ ਭਰ ਲੁੱਦ ਸਰਬਲੋ ਜੀ ਦੀ ਸਦਾ ਰੱਛਾ ਹਮਨੇ ਸਰਬਲੋ ਜੀ ਦੀ ਸਦਾ ਰੱਛਾ ਹਮਨੇ ਉਹੀ ਸਰਬਲੋ ਫੇਰ ਆ ਗਿਆ ਸਰਬ ਫੇਰ ਆ ਗਿਆ ਸਦਾ ਰੱਛਾ ਕਿੰਨਾ ਗੱਲਾਂ ਵਿੱਚ ਸਦਾ ਹੋਰ ਰੱਛਾ ਉਹਦੇ ਗੁਣ ਨੇ ਜਿਹੜੇ ਤਿੰਨ ਗੱਲਾਂ ਸਾਡੀ ਰੱਛਾ ਕਰਦੇ ਤਿੰਨ ਗੱਲਾਂ ਉੱਤੇ ਵੀ ਉਹੀ ਹੈ ਉੱਤੇ ਇੱਕ ਗੱਲ ਦੀ ਗੱਲ ਐ ਥੱਲੇ ਤਿੰਨ ਸਰਬ ਦੀ ਗੱਲ ਆ ਗਈ ਉੱਤੇ ਲੋ ਆਇਆ ਸਰਬ ਲੋ ਆਇਆ ਤੇ ਸਰਬ ਉੱਤੇ ਸਰਬ ਲੋ ਜੀ ਦੀ ਸਦਾ ਰਛਾ ਹਮਨ ਸਦਾ ਦੀ ਉੱਤੇ ਆਇਆ ਤੇ ਸਦਾ ਆ ਗਿਆ ਲੋ ਜੇ ਸਦਾ ਆ ਗਿਆ ਨਾ ਤਨ ਗਾਲੂਗੇ ਸਰਬ ਲੋ ਆਉਣ ਸਾਰੇ ਕੋਲ ਸਦਾ ਹੀ ਰਛਾ ਕਰਦੇ ਜੀ ਅਗਲਾ ਲਖਾਰੀ ਕੇ ਚਾਰ ਪੰਕਤੀਆਂ ਲਿਖ ਕੇ ਥੱਲੇ ਸਾਈਨ ਕੀਤੇ ਤੋਂ ਪ੍ਰਸਾਦ ਚੌਪਈ ਰਣਬੋ ਆਦ ਏਕੰਕਾਰਾ ਨੇ ਸਿਰ ਜਿੰਨਾ ਕੁਝ ਵੀ ਦਸਮ ਪਾਸ਼ਾ ਨੇ ਲਿਖਿਆ ਇਹ ਚਾਰ ਪੰਕਤੀਆਂ ਸਿਰ ਉਹਨਾਂ ਨੇ ਆਪਣੇ ਹੱਥ ਨਾਲ ਲਿਖੀਆਂ ਕਿਉਂ ਲਿਖਿਆ ਨੇ ਕਿਸ ਨੂੰ ਪੁੱਛਿਆਦਾ ਹੈ ਜੀ ਨਾ ਕੋਈ ਇਹਦਾ ਕਿਤੇ ਜਵਾਬ ਇਹ ਬਿਲਦਾ ਪਰ ਅਨਵਾਨ ਕਈ ਸਿਮ ਪੁਰਾਣਿਆਂ ਦਾ ਸੀਗਾ ਇਹੋ ਜਿਹਾ ਬਈ ਭਾਈ ਬਣੀਸ ਨੂੰ ਉਹ ਗੱਲ ਕਿਹਾ ਸੀ ਤੂੰ ਲਿਖੀ ਜਿਹੜੀ ਤੂੰ ਸਮਝ ਲਵੇ ਜਿਹੜੀ ਤੈਨੂੰ ਸਮਝਣਾ ਆਵੇ ਲਿਖੀ ਲੋ ਜੇ ਲੇਖਣਾਂ ਨੇ ਨੂੰ ਸਮਝ ਨਹੀਂ ਆਈ ਪਾਈਵ ਨੇ ਸੋਨੇ ਗਾ ਵੀ ਮੈਨੂੰ ਸਮਝ ਨਹੀਂ ਆਈ ਉਹ ਪੰਕਤੀਆਂ ਜਦੋਂ ਉਹਨੇ ਇਹ ਗੱਲ ਪੰਕਤੀਆਂ ਬੋਲੀਆਂ ਨੇ ਚਾਰੇ ਉਹ ਕਹਿੰਦਾ ਮੈਨੂੰ ਸਮਝ ਨਹੀਂ ਆਈ ਉਹਨੇ ਦਵਰ ਨੇ ਆਹ ਬਲਿਖ ਦਿੱਤੀ ਪਿੱਛੇ ਸਮਝਾ ਵੀ ਦਿੱਤਾ ਉਹਨੂੰ ਸਮਝਾ ਦਿੱਤਾ ਪਿੱਛੋਂ ਪਰ ਉਹਨਾਂ ਨੇ ਆਹ ਬਲਿਖ ਕੇ ਫਿਰ ਇਹ ਪੰਕਤੀਆਂ ਚਾਰੇ ਇਹ ਇੱਕ ਅਜੀਬ ਕਿਸਮ ਦੀਆਂ ਪੰਕਤੀਆਂ ਨੇ ਚਾਰੇ ਇਹਨਾਂ ਦੀ ਹੋਰ ਕਦੇ ਵਿਆਖਿਆ ਨਹੀਂ ਹੁੰਦੀ ਇਹਨਾਂ ਵੀ ਨਹੀਂ ਕੀਤੀ ਆਲਦੀ ਕੇ ਸਾਈਨ ਵੀ ਥੱਲੇ ਕਰਦੇ ਦੇ ਵਿੱਚ ਲਦੀ ਹੈ ਪਰਾਲੇ ਇਹ ਗੱਲ ਸੀਗੀ ਤਾਂ ਉਹਨਾਂ ਨੇ ਲਿਖੀਆਂ ਨਹੀਂ ਸਵਾਲ ਕੀਤੇ ਹੋਰ ਕੋਈ ਕਾਰਡ ਜਿਹੜਾ ਬਹੁਤਾ ਵੱਡਾ ਕਾਰਡ ਕੋਈ ਤਉ ਪ੍ਰਸਾਦ ਚਉਪਈ ਪ੍ਰਣਮੋ ਆਦ ਇੱਕ ਓੰਕਾਰਾ ਪ੍ਰਣਾਮ ਆ ਇੱਕ ਓੰਕਾਰ ਮੈਂ ਪ੍ਰਣਾਮ ਕਰਦਾ ਹਾਂ ਉਸ ਆਦ ਰੂ ਜਿਹੜਾ ਇੱਕ ਓੰਕਾਰ ਜਿਹਦਾ ਆਕਾਰ ਤਾਂ ਹੈ ਆਕਾਰ ਤਾਂ ਹੈ ਹੈ ਦਾ ਸਮਝਾ ਓੰਕਾਰਾ ਕੀ ਹੈ ਓੰਕਾਰਾ ਸ਼ਬਦ ਗੁਰੂ ਹੈ ਓੰਕਾਰ ਇੱਕ ਓੰਕਾਰ ਬਣ ਗਿਆ ਫਿਰ ਜਦ ਰਮਕਾਰ ਆਕਾਰ ਤਰਦਰ ਫਿਰ ਉਹ ਘਰ ਬਣਦਾ ਹੈ ਜਾਂ ਇੱਕ ਬਣਦਾ ਫਿਰ ਆਕਾਰ ਤਰਦਾ ਸ਼ਬਦ ਰੂਪ ਹੁੰਦਾ ਫਿਰ ਇੱਕ ਘਰ ਬਣਦਾ ਸੱਚ ਖੰਡ ਜੋ ਜਿਹੜੀ ਆਵਾਜ਼ ਆਉਂਦੀ ਹੈ ਸਾਰਿਆਂ ਦੀ ਇਕੱਠੀ ਉਹ ਇੱਕ ਘਰ ਆਵਾਜ਼ ਆਵਾਜ਼ ਇਕ ਪਰ ਉਹ ਸਾਰਿਆਂ ਦਾ ਆਕਾਰ ਹੈ ਸਾਰਿਆਂ ਦੇ ਵਿੱਚ ਹੋਈ ਹੋਈ ਹੈ ਅਵਾਇ ਤਾਂ ਇੱਕ ਹੈ ਪਰ ਬੰਦੇ ਇੱਕ ਦੀ ਆਵਾਜ਼ ਨਹੀਂ ਹੈ ਆਵਾਜ਼ ਫਰਕਦੀ ਦੋਰੀ ਲੱਗਦੀਆਂ ਐ ਨਹੀਂ ਲੱਗਦਾ ਕਿ ਦੋਨੋਂ ਤੇ ਬੋਲਦੇ ਨੇ ਕਈ ਵਾਰ ਰਾਗੀ ਅੱਗੇ ਪਿੱਛੇ ਹੋ ਜਾਂਦਾ ਥੋੜਾ ਬਹੁਤਾ ਐ ਲੱਗਣਾ ਕਿ ਅੰਦਰ ਵੀ ਆਦਮੀ ਦੋ ਤਿੰਨ ਚਾਰ ਬੋਲਦੇ ਨੇ ਇੱਕੋ ਹੀ ਆਵਾਜ਼ ਆਉਂਦੀ ਹੈ ਇੱਕੋ ਹੀ ਆਦਮੀ ਬੋਲਦਾ ਲੱਗਦਾ ਪਰ ਬੋਲਦੇ ਸਾਰੇ ਹੀ एक है, आकार रूप है एक है, अकार एक प्रबंधा एक नहीं है अनेक है फिर एक है। एक है, अनेक है अनेक होता है भी एक हीड़ा एकम पर सोच एक है onu पढ़ना सोत्य का शब्द का हुकम एक, है, एक है, पर सारे हैं ਸੋਚ ਕਰਕੇ ਇੱਕ ਨਾ ਵਖਰੇ ਵਖਰੇ ਸਾਰੇ ਬੜਾ ਛੋਟਾ ਨਹੀਂ ਨੇ ਉੱਥੇ ਕੋਈ ਬੜਾ ਛੋਟਾ ਨਹੀਂ ਕੋਈ ਉੱਚੀ ਨੀਚੀ ਨਹੀਂ ਕੋਈ ਘੱਟ ਵੱਧ ਅਕਲ ਨਹੀਂ ਹੈ ਕਿਸੇ ਦੀ ਘੱਟ ਵੱਖਰੀ ਸੋਚ ਨਹੀਂ ਹੈ ਕਿਸੇ ਦੀ ਰੰਗ ਰੂਪ ਦਾ ਇਸ ਕਰਕੇ ਗੁਰੂ ਚੇਲਾ ਇਹਦੇ ਵਿੱਚ ਨਹੀਂ ਹੋ ਸਕਦੇ ਜਿਹਨਾਂ ਦੇ ਵਿੱਚ ਗੁਰੂ ਚੇਲੇ ਨੇ ਧਰਮਾਂ ਚੋਂ ਸੱਚਖੰਡ ਤੱਕ ਜਾਏ ਨਹੀਂ ਸਕਦੇ ਪਹੁੰਚੇ ਨਹੀਂ ਸਕਦੇ ਕਿਉਂਨਾਂ ਚ ਭੇਦਭਾਵ ਹੈ ਬੜਾ ਛੋਟਾ ਬڑا ਛੋਟਾ ਮਟਾ ਕੇ ਇਥੋਂ ਤਾਂ ਸੱਚਖੰਡ 'ਚ ਪਰਵੇਸ਼ ਮਿਲਦਾ ਜਿਹੜਾ ਇੱਥੇ ਗੁਰੂ ਆ ਉਹ ਸੱਚਖੰਡ ਕਿਵੇਂ ਚਲਾ ਜਾਊਗਾ ਕੋਰਡ ਫੜ ਲੈ ਦੂ ਉੱਥੇ ਉਹਦਾ ਦਿਮਾਗ 'ਚ ਬੜੱਪਣ ਆਈ ਹੋਈ ਆ ਆਪਣੇ ਕੋਲ ਜੋ ਜਾਣੇ ਉੱਚਾ ਸੋਈ ਗੜੀ ਸਭ ਤੇ ਨੀਚਾ ਉਹਨੇ ਬੜਨ ਦੇ ਉੱਥੇ ਸਿਕਾ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਉਹ ਇਹ ਗੱਲ ਦੀ ਤੁਹਾਨੂੰ ਦਿਆ ਕੀਤੀ ਵਾਹਣ ਗੁਰੂ ਆ ਜਗਤ ਕਾ ਭਗਤ ਸੰਕਾ ਕੋ ਹੈ ਇਹ ਗੁਰੂ ਤਾਂ ਹਟਾਇਆ ਸੀ ਉਹ ਜਿਹੜਾ ਹਟਾਇਆ ਸੀ ਉਹ ਹੀ ਸਾਨੂੰ ਫੇਰ ਪੜਾਤਾ ਆਪਣੇ ਵਰਗਾ ਲੇ। ਵੀ ਸਾਡੇ ਵਰਗੇ ਜਦੋਂ ਤੁਸੀਂ ਤੁਸੀਂ ਬਣਾ ਜਾ ਸਕੋ ਬਹੁਤ। ਹੁਣ ਕਹਿ ਨਹੀਂ ਸਕਦੇ ਉਹਨਾਂ ਨੂੰ ਵੀ ਤੁਸੀਂ ਗੁਰੂ ਨਹੀਂ। ਕਿਵੇਂ ਕਹੀਏ ਕਿਹੜੇ ਬੋਲਾਂ ਕਹੀਏ। ਇਸੇ ਗੱਲ ਦਾ ਰੌਲਾ ਦਾਸ ਗੁਰੂ ਜੀ ਵੇਦਾਰੀ ਹੋ ਸਕਦੇ ਨੇ ਤਾਂ ਹੁਣ ਕਿਉਂ ਨਹੀਂ ਹੋ ਸਕਦੇ? ਕੱਲ ਵੀ ਠੀਕ। ਉਹਨਾਂ ਨੇ ਦਾ ਜਵਾਬ ਦਿੱਤਾ ਸੀ ਉਹ ਸ਼ਬਦ ਗੁਰੂ ਹੁੰਦਾ ਹੈ ਸੁਰਦ ਤੋਂ ਜੈਲਾ ਸ਼ਗਲ ਗੁਰੂ ਆਪਣੀ ਜਗ੍ਹਾ ਹੈਗਾ ਹੁਣ ਵੀ ਦੇਹਤਾਰੀ ਵੀ ਗੁਰੂ ਹੈਗੇ ਐਸੇ ਤਰੀਕੇ ਨਾਲ ਫਸ ਗਏ ਬੇ ਨਾਲ ਫਸ ਗਏ ਬੇ ਸਮਝੀ ਵੈਸੇ ਪੁੱਛਤਾ ਉਹਨੂੰ ਗੱਲ ਕੀਤੀ ਕਹਿੰਦੇ ਨੇ ਤਾਂ ਉਹ ਕਹਿੰਦੇ ਤਾਂ ਉਹ ਬੜੀਏ ਤਾਂ ਉਹ ਕਹਿਣਾ ਬੜੀਏ ਤਾਂ ਉਹ ਗਲਤੀਆਂ ਪਿੱਛੇ ਹੋ ਜਾਂਦੀਆਂ ਨੇ ਜਾਨਵਰ ਜਿਹੇ ਕਰਾਈਆਂ ਹੋਈਆਂ ਨੇ ਉਹਦੋਂ ਵੇਸੜੇ ਰਹੇ ਧਿਆਨ ਨਹੀਂ ਦਿੱਤਾ ਵੇਦ ਜਦੋਂ ਕਿਸੇ ਚੀਜ਼ ਧਿਆਨ ਨਾਲ ਨਹੀਂ ਇਕ ਜਾਂਦਾ ਹੁੰਦਾ ਕੋਈ ਕੰਮ ਕਰੋ ਧਿਆਨ ਨਾਲ ਕੋਈ ਗੱਡੀ ਨਾ ਚਲਾਓ ਐਕਸੀਡੈਂਟ ਹੋ ਧਿਆਨ ਤੇ ਬਿਨਾ ਕੋਈ ਕੰਮ ਵੀ ਬਿਗੜ ਜਾਂਦਾ ਫਿਰ ਇਹਦਾ ਹੀ ਕਹਿਸਾ ਤਰਵ ਧਰਮ ਨੇ ਖੁਮਚਤਾ ਮੇਰਾ ਧਿਆਨ ਦੀ ਉਹ ਲੋੜ ਹੈ ਧਿਆਨ ਤੇ ਮੇਰਾ ਦਰਪਕਾ ਦਾ ਜਿੱਦ ਤੱਕ ਧਿਆਨ ਹੈ ਉੱਥੇ ਧਰਮ ਹੈ ਜੇ ਧਿਆਨ ਨਹੀਂ ਤਾਂ ਧਰਮ ਹੈ ਨਹੀਂ ਸਾਡਾ ਧਰਮ ਚ ਨਹੀਂ ਧਰਮ ਕਿਥੋਂ ਰਹਿਣਾ ਸੀ ਧਾਂ ਦਾ ਰਾਜ ਵਿੱਚ ਰਿਹਾ ਟਾਰਗੇਟ ਦਾ ਰਾਜ ਸੀ ਤੁਹਾਨੂੰ ਗਿਆ ਰਾਜ ਵੀ ਗਿਆ ਦੋ ਬਾਬਾ ਮੇ ਗਏ ਬਾਇਬਲੀ ਦਾ ਨਾਮ ਉਹ ਥੋੜਾ ਜਰਵਾਦੇ ਦਾ ਰਾਜ ਮਿਲ ਗਿਆ ਰਜੀਤ ਸਰੂ ਪਿਆਨ ਸਾਰਾ ਹੀ ਰਾਜ ਦੇ ਲੜਾਈ ਝਗੜੇ ਹੀ ਰਹਿ ਗਿਆ ਧਰਮ ਗਾਇਬ ਹੋ ਗਿਆ ਉਹਨਾਂ ਨੇ ਧਰਮ ਸਾਮਲਿਆ ਸਾਡਾ ਗੁਰਦੁਆਰੇ ਸਾਹਮਣੇ ਧਰਮ ਦਾ ਹਿੱਟ ਲੋਕ ਹੋਰ ਪਾਸੇ ਨੂੰ ਮੋੜ ਉਹਨਾਂ ਨੇ ਵੀ ਕਹਿ ਠੀਕ ਹੈ ਵੀ ਬਾਤ ਕਰ ਲਾਂਗੇ ਇਹਨਾਂ ਦੀ ਹਿੰਦੂਆਂ ਦੀ ਲੈ ਕੇ ਮੰਨਦ ਆਪਾਂ ਰਾਜ ਕਰ ਲਈਏ ਪਹਿਲੋਂ ਧਰਮ ਛੜਤਾ ਰੋਟੀ ਖਾਣ ਲੱਗੇ ਖੂਬ ਸਾਰੇ ਘੜਤਾ। ਰੋਟੀ ਤੇ ਨੂੰ ਜੋਗਾ ਨਹੀਂ ਰੱਖ ਸਕਦੀ ਜਿਹੜਾ ਪਹਿਲਾ ਖੂਬ ਸਾਰੇ ਘੜਤਾ ਤਾਂ ਉਹ ਤਾਂ ਰਗਣ ਗਿਆ। ਦੁੱਧ ਵੀ ਪੀ ਜਾ ਕਿਉਂ ਵੀ ਉਹ ਜਾ ਹਜਮ ਚ ਪਹਿਲਾ ਸਾਰਾ ਹੀ ਤਨਸੀਰ ਹੋਇਆ ਕਰਤਾ। ਸਾਰੇ ਘੜਤਾ ਉਹ ਉਸ ਵੇਲੇ ਉਹ ਉਹਨਾਂ ਨੇ ਸਾਰਾ ਕੁਝ ਆਪਣਾ ਬਾੜਤਾ ਪਰ ਕਰਤਾ ਸਾਖੀ ਬਾੜਤੀ। ਉੜਾ ਜਾ ਹੁਣ ਖੋਜ ਜੱਲੀ ਆਪ ਖੋਜ ਕਰਨ ਲੱਗੇ ਸਾਡੇ ਬੰਦੇ ਸਿੱਖ ਆਪਣੀ ਡਿਪੈਂਡੈਂਟ ਹੋ ਕੇ ਜੇ ਦੇਖਦੇ ਇੱਥੇ ਤਾਂ ਹੋਰ ਕੁਝ ਲਿਖਿਆ ਹੈ ਹੁ ਰੌੜਾ ਪਿਆ ਹੋਇਆ ਰੌੜਾ ਤਾਂ ਪਿਆ ਪਿੱਛੇ ਧਿਆਨ ਨਹੀਂ ਦਿੱਤਾ ਕੀ ਹੈ ਜਾਂ ਤਾਂ ਵੈਦਰੂ ਪਿੱਛੇ ਜਾਂ ਬਾਣੇ ਮੋਟੇ ਸ਼ਬਦ ਪੜ੍ਹ ਲੈਣ ਦੇਸੀ ਜਾਂ ਫਿਰ ਪਾਠ ਕਰ ਲੈਣਾ ਸਮਝ ਕੋਈ ਨਾ ਸਮਝਣ ਦੀ ਕੋਸ਼ਿਸ਼ ਐਂ ਕੀਤੀ ਹਾਈ ਜਲਥਲ ਮਹੀਲ ਕਿਉ ਵਿਸਾਰਾ ਪ੍ਰਣਭੋ ਆਦੇ ਕੰਕਰਾ ਜਲਸਲ ਵਿਸਾਰਾ ਜਿਹਨੇ ਜਲ ਵਿੱਚ ਖਾਲ ਵਿੱਚ ਤਰਤੀਰ ਤਰਤੀ ਜਿੱਤੇ ਹਰੀ ਭਰਾ ਰਹੇ ਨੇ ਹਰ ਵਕਤ ਉਹ ਸਭ ਉਹਨੂੰ ਧਰਤੀ ਕਹਿੰਦੇ ਨੇ ਇੱਥੇ ਵੀ ਦੇਰ ਬਾਅਦ ਨੇ ਆਮ ਨੇ ਜੰਗਲ ਹੁੰਦਾ ਬਾਰਿਸ਼ ਪੈਂਦੀ ਰਹਦੀ ਹੈ ਗਿੱਲਾ ਰਹਿੰਦਾ ਤੇ ਤਾਂ ਗੱਲਾਂ ਨੇ ਦੂਰ ਤੱਕ ਰਹਿਣਾ ਨਾ ਸਾਰਾ ਸਾਲ ਪੱਥਰ ਉਹ ਜਰਦਾ ਮਰੂਦਲ ਵੀ ਨਾ ਪਵੇ ਉਹਨੂੰ ਥਲ ਕਹਿੰਦੇ ਨੇ ਥਲ ਦੇ ਵਿੱਚ ਵੀ ਜੇ بارش ਹੋ ਜਵੇ ਤਾਂ ਉੱਗ ਜਾਂਦਾ ਨਾ ਕੁਝ ਇਹਨਾਂ ਦਾ ਜਲ ਥਲਰ ਰੱਈਲ ਧਰਤੀ ਵਿੱਚ ਪਸਾਰਾ ਕੀਤਾ ਜਿਹਨੂੰ ਸਾਰਾ ਬਣਾਇਆ ਪਰ ਮੇਰੀ ਪਰਲੋਬ ਪ੍ਰਲਬੋ ਆਦੇਕੰਕਾਰ ਜਲਸਲ ਬਈਲ ਜਿਹਨੇ ਸਾਰਾ ਪਸਾਰਾ ਕੀਤਾ ਬਣਾਇਆ ਜਲਸਲ ਬਈਲ ਬਣਾਇਆ ਉਹਨੂੰ ਮੇਰੀ ਨਮਸਕਾਰ ਆਦਪੁਰਖ ਅਭਗਤ ਅਬਿਨਾਸ਼ੀ ਉਹ ਆਦਪੁਰਖ ਹੈ ਆਦਪੁਰਖ ਕੀ ਹੈ ਸਾਰਿਆਂ ਹੈ ਪੁਰਖ ਕਹਿੰਦੇ ਕੀ ਨੂੰ ਦੇਖੋ ਪੁਰਖ ਸ਼ਬਦ ਨੂੰ ਕੀ ਹੋਇਆ ਜੋ ਪੈਦਾ ਹੋਇਆ ਜੋ ਚੀਜ਼ ਪੈਦਾ ਹੋਈ ਹੈ ਜੋ ਉਪਜਿਓ ਸੋ ਜੋ ਚੀਜ਼ ਪੈਦਾ ਹੋਈ ਹੈ ਉਹਨੇ ਬੇਸ਼ੈ ਨਹੀਂ ਰੜੋ ਆਹ ਕਹ ਲਿਆ ਸ਼ਬਦ ਵੀ ਬੇਸ਼ੈ ਨਹੀਂ ਰਹਿੰਦਾ ਕਿ ਪੈਦਾ ਜੋ ਹੋਇਆ ਹੋਇਆ ਵਸੇ ਗੁਪਤ ਹੋ ਜਾਂਦਾ ਪ੍ਰਗਟ ਹੋ ਜਾਂਦਾ ਸ਼ਬਦ ਹਮੇਸ਼ਾ ਨਹੀਂ ਰਹਿੰਦਾ ਜਿਹੜਾ ਜੀਵ ਹੈ ਵੀ ਪੁਰਖਾ ਇਹ ਪੁਰਖਾ ਜਦ ਜਿਹੜੀ ਆਵਾਜ਼ ਕਰਕੇ ਹੀ ਹੈ ਮਨ ਬੋਲਦਾ ਤਾਂ ਪੁਰਖਾ ਤੇ ਤ ਬੋਲਦਾ ਤਾਂ ਪੁਰਖਾ ਨਾ ਬੋਲੇ ਤਾਂ ਡੱਡਾ ਹੈ ਜੇ ਸੌ ਜਾਂਦਾ ਓਦੋਂ ਬੋਲਦਾ ਨਹੀਂ ਓਦੋਂ ਨੂੰ ਡੱਡਾ ਬਣੇ ਜਾਂਦਾ ਮੇਰੇ ਪੁਰਖ ਨਹੀਂ ਹੈ ਪੁਰਖ ਹੁੰਦਾ ਬੋਲਦਾ ਪੁਰਖ ਜੋ ਬੋਲਦਾ ਉਹੀ ਪੁਰਖ ਹੈ ਜੋ ਨਹੀਂ ਬੋਲਦਾ ਪੁਰਖਾ ਨਾ ਪੁਰਖ ਦਾ ਲਫ਼ਧੀਆ ਅਰਥ ਕੀ ਹੈ ਪੂਰਾ ਕਰਨ ਵਾਲਾ ਅਧੂਰੇ ਨੂੰ ਪੂਰਾ ਕਰਨ ਵਾਲਾ ਅਧੂਰੇ ਗੱਲ ਨੂੰ ਪੂਰਾ ਭੋਲ ਕੇ ਬਿਨਾ ਹੋਈ ਸ਼ਬਦ ਪੂਰਾ ਕਰਦਾ ਨਾ ਬੋਲ ਆਵਾਜ਼ੇ ਪੂਰਾ ਕਰੂ ਦੂਰੇ ਨੂੰ ਗਾਇਨਾ ਆਵਾਜ਼ ਤੇ ਬਿਲ ਨਹੀਂ ਬਿਲਦਾ ਹੁੰਦਾ ਸ਼ਬਦ ਪੁਰਖ ਹੈ ਪੂਰਾ ਕਰਨ ਵਾਲਾ ਇਹਦਾ ਪੂਰਾ ਕਰਦਾ ਕੀ ਕਰਦਾ ਖੈ ਕਰਦਾ ਪੂਰਾ ਕਰਦਾ ਹੈ ਵੀ ਕਰਦਾ ਨਾਲ ਮਾਰਦਾ ਵੀ ਉਹ ਮਾਰਦਾ ਵੀ ਤਾਂ ਹੈ ਨਾ ਇਹ ਨਾਸ ਕਰਦਾ ਹੈ ਪੂਰਾ ਕਰਦਾ ਹੈ ਇਹ ਬੁਲਾਉਂਦਾ ਹੈ ਘਟਾਉਂਦਾ ਇੱਕ ਐਸਾ ਵੀ ਸ਼ਬਦ ਹੈ ਜਿਹੜਾ ਗਿਆਨ ਘਟਾਉਂਦਾ ਪਰਮ ਗਿਆਨੀ ਕੀ ਕਰਦੇ ਨੇ ਉਹ ਖਟਾਉ ਵੀ ਨੇ ਮਨ ਜਿਹੜਾ ਹੈਗਾ ਪੁਰਖ ਜੇ ਬੋਲਦਾ ਤਾਂ ਪਰ ਬੁਲਾਉਂਦਾ ਜੇ ਦੁਆ ਬੋਲਦਾ ਬਖਤੀਲ ਕੋ ਦਾ ਪੁਰਖ ਦੋਏ ਨੇ ਇੱਕ ਪਰਮਪਲਾਏ ਇੱਕ ਬਖਤੀਲਾਏ ਸਭ ਤੇਰੇ ਹੁਕਮ ਸਭ ਤੇਰਾ ਹੁਕਮ ਅਪਾਰ ਦੋ ਕਸਮ ਦੇ ਪੁਰਖ ਨੇ ਦੋ ਕਿਸਮ ਦੀ ਆਵਾਜ਼ ਹੈ ਕਹਾਂ ਦੇ ਦੋ ਵੀ ਪੁਰਖ ਨੇ ਉੱਪਰ ਪਰਮ ਪੂਰਾ ਕਰਦੇ ਨੇ ਪਰਮ ਦੀ ਕਮੀ ਜਿਹੜੀ ਆ ਉਹਨੂੰ ਪੂਰੀ ਕਰਦੇ ਨੇ ਇਹ ਪਰਮ ਘਾਟਾ ਨਾ ਉਹਨੂੰ ਹੋਰ ਵਧਾਉਂਦੇ ਨੇ ਅਰੁਦੀ ਕਵੀ ਹੋਵੇ ਕਿਸੇ ਕੋਲ ਕਮਿਨਿਆੜ ਦੇ ਪਰਮਤੀ ਪਰਮਦੇ ਕਵੀ ਪੂਰੀ ਕਰਦੇ ਨੇ ਇੱਕ ਕਿਸਮ ਦੇ ਪੁਰਖ ਤਾਂ ਪਰ ਪੁਲਾਉਂਦੇ ਨੇ ਇੱਕ ਭਗਤੀ ਲੈ ਭਗਤੀ ਲਾਉਣ ਵਾਲੇ ਕਹਿੰਦੇ ਨੇ ਗਿਆਨ ਦੇ ਕਵੀ ਪੂਰੀ ਕਰਦੇ ਨੇ ਜਿਹੜੇ ਪਰਮਦੀ ਕਮੇ ਪੂਰੀ ਕਰਦੇ ਨੇ ਪਰਮ ਗਿਆਨੀ ਨੇ ਉਹ ਕੌਣ ਨੇ ਕੋ ਜਪਕੇ ਦੂਤਰ ਜਪਰਵਨ ਨਾ ਜੰਮ ਪਰਮਾ ਉਹਨਾਂ ਨੂੰ ਜੰਮ ਕੇ ਦੂਤ ਕਹਿੰਦੇ ਨੇ ਹੁੰਦੇ ਆਦਮੀ ਉਹਨੇ ਜੰਮ ਕੇ ਦੂਤ aur ਕੋਈ ਨਹੀਂ ਹੁੰਦੇ ਆਦਮੀ ਉਹਦੇ ਜੰਮ ਕੇ ਦੂਤ ਕਹ ਲੋ ਜੰਮ ਕੇ ਲਓ ਉਹਨਾਂ ਨੂੰ ਚਾਹੇ ਹਰਨਾ ਵਾਜਾ ਤੇ ਸਖਦਾਰਾਂ ਨਾ ਫਾਈ ਥੋ ਜਿਹੜੇ ਜੰਮ ਕੇ ਜਾਲ ਜਪਸਾਰੇ ਨੇ ਆਪਣੇ ਉਪਦੇਸ਼ ਨਾਲ ਲੋਕਾਂ ਨੂੰ ਜੰਮ ਕੇ ਦੂਤ ਲਿਓ ਹੁਣ ਕਦੇ ਨਹੀਂ ਹੁੰਦੇ ਜੰਮ ਕੇ ਦੂਤ ਬਾਹਰ ਦੁਰਜਾਨੂ ਜੋ ਵਰਜੀ ਕਹੀ ਜਾਣ ਉਹ ਆਪੇ ਜੰਮ ਕੇ ਦੂਤ ਨੇ ਜਿਹੜੇ ਪ੍ਰਚਾਰ ਕਰਦੇ ਨੇ ਜਿਹੜੇ ਖੋਲਣ ਵਾਲੇ ਨੇ ਪਰਬ ਦੂਰ ਕਰਨ ਵਾਲੇ ਉਹ ਬੰਦੀ ਛੋੜਣ ਅਸਲ ਤੇ ਬੰਦੀ ਛੋੜ ਦੇਣ ਜਿਹੜੇ ਬੰਨ੍ਹ ਕੱਟ ਰਹੇ ਨੇ ਤੋੜੇ ਬੰਧਨ ਹੋਵੇ ਮੁਕਤ ਮੁਕਤ ਜਿਹੜੇ ਆਪਣਾ ਜਿਹੜੇ ਗੁਰਬਾਣੀ ਦੇ ਜਿਹੜੇ ਵਿਆਖਿਆ ਉਪਦੇਸ਼ ਨੂੰ ਆਪਣੇ ਬੰਧਨ ਕੱਟ ਰਹੇ ਨੇ ਇਹ ਗੁਰਬਾਣੀ ਦਾ ਐਸਾ ਉਪਦੇਸ਼ ਕਰ ਰਹੇ ਨੇ ਜਿੱਦੇ ਨਾਲ ਕੋਈ ਬੰਧਨ ਕੱਟ ਲਵੇ ਸਮਝ ਕੇ ਉਹ ਬੰਦੀ ਛੋੜ ਬੰਦੀ ਛੋੜਦਾ ਗੁਰਬਾਣੀ ਹੈ ਅਸਲ ਦੇ ਵਿੱਚ ਬੰਦੀ ਛੋੜਦਾ ਗੁਰਬਾਣੀ ਹੋਈ ਹੈ ਇਹ ਬੰਦੀ ਛੋੜ ਸੱਚਾ ਸੱਚਾਰੇ ਬੰਦੀ ਛੋੜਨੇ ਕੂੜਿਆਰੇ ਜਿਹੜੇ ਜੋਕੇ ਦੂਤ ਨੇ ਐਂ ਕਹ ਲੋ ਕਿ ਸਚਿਆਰੇ ਨੇ ਬੰਦੀ ਛੋੜਨੇ ਬੰਦੀ ਛੋੜਦੇ ਪਰਥਾਏ ਕੰਮ ਕਰਦੇ ਨੇ ਨਾ ਉਹ ਬੰਦੀ ਛੋੜਦਾ ਨਹੀਂ ਆ ਮੰਦੀ ਛੋੜਦੇ ਪਰਥਾਏ ਕੰਮ ਕਰਦੇ ਨੇ ਬੋਲਦੇ ਨੇ ਉਹ ਜੰਮਦੇ ਪਰਥਾਏ ਕੰਮ ਕਰਦੇ ਨੇ ਤੂਏ ਜੰਮ ਕੇ ਦੂਤਾਂ ਸਚਾਰੇ ਨੇ ਉਹ ਬੰਦੀ ਛੋੜ ਦੇ ਪ੍ਰਥਾਏ ਘੱਮ ਕਰਦੇ ਨੇ ਬੰਦੀ ਛੋੜ ਦੇ ਆਦਪੁਰਖ ਅਬਿਗਤ ਅਬਨਾਸ਼ੀ ਆਦਪੁਰਖ ਆਦਪੁਰਖ ਹੁਕਮ ਹੈ ਸਭ ਤੋਂ ਪਹਿਲਾਂ ਜਿਹੜਾ ਪੈਦਾ ਹੋਇਆ ਪੁਰਖ ਚੁੱਕੇ ਇੱਕ ਵਚਨ ਇੱਕ ਵਚਨ ਇੱਕ ਇੱਕ ਕੀ ਹੈ ਕੋ ਹੁਕਮ ਹੈ ਉਹ ਆਵਾਜ਼ ਇੱਕਾ ਸਾਰਿਆਂ ਦੀ ਉਹ ਹੀ ਆਦਪੁਰਖ ਆਦਪੁਰਖ ਤੇ ਆ ਕੇ ਲਿਖਾ ਪਈ ਦੁਨੀਆ ਬਖਾਨੀ ਰਬ ਕੋਈ ਹੈ ਆਦਪੁਰਖ ਦਾ ਹਕੂਮ ਦਾ ਨਾਮ ਹੈ ਆਵਾਜ਼ ਸਾਰਿਆਂ ਦੀ ਇਕ ਜਿਹੜੀ ਉਹ ਰੁਗਿਆ ਆਦਪੁਰਖ ਇਕੰਕਾਰ ਹੈ ਇਕੰਕਾਰ ਹੈ ਇਹ ਆਦਪੁਰਖ ਅਭਿਗਤ ਹੈ ਅਵਨਾਸ਼ੀ ਅਵਨਾਸ਼ੀ ਦੋ ਗੋਲ ਹੋਣ ਨਾਲ ਦੋ ਗੋਲ ਲੱਗੇ ਨੇ ਅਭਿਗਤ ਹੈ ਅਵਨਾਸ਼ੀ ਹੈ ਢੋਲ ਹੈ ਢੋਲਦਾ ਨਹੀਂ ਹੈ ਅਭਿਗਤ ਢੋਲਦਾ ਨਹੀਂ ਹੈ ਅਵਨਾਸ਼ੀਆ ਨਾਸ਼ਵੰਤ ਨਹੀਂ ਹੈ ਚੁੱਪ ਕਰ ਜਾਣਾ ਪ੍ਰਗਟ ਹੋਣਾ ਅਲੱਗ ਗੱਲ ਹੈ ਅਵਨਾਸ਼ੀਆ ਹੁੰਦਾ ਜਿਹਨੂੰ ਦੂਆ ਆ ਕੇ ਬਿਠਾ ਦਵੇ ਜਿਵੇਂ ਚੋੜ ਦੀ ਆਵਾਜ਼ ਨੂੰ ਸੱਚ ਪ੍ਰਗਟ ਹੋ ਕੇ ਖਮੋਸ਼ ਕਰ ਦੋਤੇ ਇਹਨੂੰ ਕੋਈ ਨਹੀਂ ਖਮੋਸ਼ ਕਰਦਾ ਆਪਣੇ ਆਪ ਖਮੋਸ਼ ਹੋ ਜਾਂਦਾ ਜਿਹਨੂੰ ਦੂਸਰਾ ਖਮੋਸ਼ ਕਰਨ ਦੀ ਤਾਕਤ ਰੱਖਦਾ ਉਹ ਉਹ ਨਾਸ਼ਵੰਤ ਹੈ ਜਿਹਨੂੰ ਦੂਸਰਾ ਕੋਈ ਖਮੋਸ਼ ਕਰਨ ਦੀ ਤਾਕਤ ਨਹੀਂ ਰੱਖਦਾ ਉਹ ਬਨਰਸ਼ੀ ਹੈ ਆਪਣੇ ਆਪੇ ਖਮੋਸ਼ ਹੁੰਦੇ ਨੇ ਉਹ ਬਰਿਆ ਨਹੀਂ ਹੈ ਆਪਣੇ ਆਪ ਖਮੋਸ਼ ਹੋਣਾ ਹੋਰ ਗੱਲ ਹੈ ਦੂਸਰਾ ਚੁੱਪ ਕਰਾਉਣਾ ਤੇ ਹੋਰ ਗੱਲ ਹੈ ਚੁੱਪ ਕਰਾਉਂਦਾ ਉਹ ਬਨਰਸ਼ੀ ਨਹੀਂ ਹੈ ਚੋੜ ਨੂੰ ਸੱਚ ਚੁੱਪ ਕਰਾ ਦਿੰਦਾ ਚੋੜ ਬਨਰਸ਼ੀ ਨਹੀਂ ਹੈ ਚੋੜਨਾ ਸੰਤਾਰ ਕਿ ਸਾਚ ਜੋਪਕਾ ਦਾ ਸਾਚ ਨੂੰ ਕਰਨ ਦੀ ਸ਼ਕਤੀ ਰੱਖਦਾ ਹੈ ਰਹਿੰਦੀ ਦਾ ਇਸ ਤਰੀਕੇ ਨਾਲ ਆਇਆ ਵੀ ਯਾਰ ਵਕਤ ਨਾ ਕਿ ਜਾਏ ਉਹ ਨਾ ਕਿ ਜਾਏ ਉਹ ਰਾਮ ਕੀ ਤੁਹਾਈ ਰਾਸਤਾ ਕੁਝ ਸੁਧਾਈ ਨਹੀਂ ਏ ਤੇ ਫਿਰ ਭਾਇਰੂ ਨਾਸੁਦ ਕੇ ਬੁਨੇ ਵਾਇਆ ਦਾ ਰੂਪ ਨਾਸੁਦ ਹੈ ਉਹਦਾ ਰੂਪ ਨਾਸ ਨਹੀਂ ਹੁੰਦਾ ਉਦਾ ਰੂਪ ਨਾਸ ਨਹੀਂ ਹੁੰਦਾ ਸੱਚ ਦਾ ਰੂਪ ਨਾਸ ਨਹੀਂ ਹੁੰਦਾ ਕੂੜ ਦਾ ਰੂਪ ਨਾਸ ਹੁੰਦਾ ਕੂੜ ਦਾ ਰੂਪ ਸਾਡਾ ਕਲਪਨਾ ਇਹ ਵੀ ਨਾਸ ਹੁੰਦੀ ਹੈ ਉੜਦੀ ਰੂਪ ਕਲਪਨਾ ਨਹੀਂ ਹੈ ਕਲਪਨਾ ਜਿਹੜਾ ਹੈ ਕੂੜ ਦਾ ਰੂਪ ਹੈ ਕਲਪਨਾ ਇਹ ਤਾਂ ਟਕਰਾਉਂਦੀ ਹੈ ਸੱਚ ਸ਼ਬਦ ਨਾਲ ਸਾਡੀ ਕਲਪਨਾ ਜਿਹੜਾ ਕੂੜ ਦਾ ਰੂਪ ਹੈ ਨਾ ਇਹ ਏਹੀ ਉਹਦੇ ਨਾਲ ਟਕਰਾਉਂਦੀ ਹੈ ਸੱਚ ਦੇ ਰੂਪ ਨਾਲ ਹੁਕਮ ਨਾਲ ਸਾਡੀ ਕਲਪਨਾ ਸਾਡਾ ਹੁਕਮ ਹੈ ਨਾ ਜਿਹੜਾ ਆਦਮੀ ਦਾ ਬਲੁਖ ਦਾ ਹੁਕਮ ਹੈ ਮੰਨਦਾ ਹੁਕਮ ਹੈ ਇਹ ਕੂੜ ਦਾ ਰੂਪ ਹੈ ਇਹ ਤਾਂ ਪਰਬਲਾਉਂਦਾ ਪਰਬਗੀ ਭਲਾਉਂਦਾ ਹੁਕਮ ਕੀ ਹੈ ਮਨ ਭਾਮਦੇ ਪਰਬਲਾਉਣ ਵਾਲਾ ਹੁਕਮ ਹੈ ਇੱਕ ਦਾ ਹੁਕਮ ਹੈਗਾ ਭਗਤੀ ਲਾਉਣ ਵਾਲਾ ਅੰਤਰਾਤਮ ਦੀ ਆਵਾਜ਼ ਹੈ ਇੱਕ ਬੰਦੇ ਵਿੱਚੋਂ ਪੈਦਾ ਹੁੰਦਾ ਹੁਕਮ ਕਲਪਣ ਇੱਛਾ ਮਾਇਆ ਦੀ ਇਹ ਹੋਰ ਹੰਕਾਰ ਦੀ ਕਬਜ਼ਾ ਕਰਨ ਦੀ ਇਹ ਕੂੜ ਦਾ ਰੂਪ ਹੈ ਇਹ ਹੁਕਮ ਕੀ ਮੰਨ ਭਾਵਦੇ ਇਹ ਪਰਪਲਾਉਣ ਵਾਲੇ ਹੁਕਮ ਨੇ ਉਹ ਭਗਤੀ ਲਾਉਣ ਵਾਲਾ ਹੁਕਮ ਅਦੋਏ ਹੁਕਮ ਕੀਦੇ ਨੇ ਇੱਕ ਦਿਨ ਵਿੱਚ ਤਾਂ ਇੱਕ ਕਰਾਂ ਅੱਧਾ ਮਨ ਹੈ ਅੱਧਾ ਚਿੱਤ ਹੈ ਚਿੱਤ ਜੋ ਅੰਤਰਾਤਮਾ ਦੀ ਆਵਾਜ਼ ਪੱਕੀ ਲਾਉਣ ਵਾਲੀ ਆ ਮੰਦੀ ਆਵਾਜ਼ ਜਿਹੜੀ ਹੈ ਪਰਪਲਾਉਣ ਵਾਲੀ ਹੈ ਉਸ ਪਰ ਬਾਪ ਦਮ ਆਇਆ ਉਹਨੂੰ ਕਿਆ ਕਰੂੰ ਕਿਆ ਹੁਕਮ ਦੋਏ ਤੇਰੇ ਨੇ ਸਭ ਤੇਰਾ ਹੁਕਮ ਪਰ ਜਿਹੜਾ ਇੱਕ ਸਾਬਤ ਆ ਨਹੀਂ ਟੁੱਟਿਆ ਇੱਕੋ ਸੱਚਖੰਡ ਬੈਠਾ ਹੈ ਉਹਨਾਂ ਸਾਰਿਆਂ ਦਾ ਹੁਕਮ ਇੱਕੋ ਦੋ ਤੋਂ ਹੈ ਨੀ ਰੋ ਉਹ ਦੋ ਤੋਂ ਨੀ ਰੋ ਹੋਏ ਜਿਹੜਾ ਦੋ ਤੋਂ ਦੋ ਹੁਕਮ ਨੇ ਜਿਹੜਾ ਇੱਕ ਤੋਂ ਦਾ ਇੱਕ ਹੁਕਮ ਇੱਕ ਹੁਕਮ ਸੱਚਾ ਹੋ ਸਕਦਾ ਦੋ ਹੁਕਮ ਜਦ ਹੋਣਗੇ ਕਿ ਸੱਚਾ ਹੋਵੇ ਕਿ ਝੂਠਾ ਹੋਵੇ ਇੱਕ ਨਾਸਵੰਦ ਹੋ ਇੱਕੋ ਕੋ ਨਾਸਵੰਦ ਜਿਹੜਾ ਝੂਠਾ ਨਾਸਵੰਦ ਜੋ ਉਪਜਿਆ ਹੈ ਝੂਠਾ ਬਾਅਦ ਚ ਉਪਜੇ ਹੁਕਮ ਉਹ ਪਹਿਲਾ ਉਪਜਿਆ ਹੋਇਆ ਜਿਹਦੇ ਨਾਲ ਸ੍ਰਿਸ਼ਟੀ ਦੇ ਜਿਹੜਾ ਹੁਕਮ ਨਾਲ ਉਹ ਪਹਿਲ ਜੋ ਬਾਅਦ ਫਾਇਦਾ ਆਇਆ ਨਾ ਸੋਦੇ ਹੁਣ ਜੋ ਉਪਜੇ ਉਸੋ ਬਿੰਦ ਸਰ ਹੈ ਪੈਦਾ ਹੋਇਆ ਕਿ ਇਹ ਨਹੀਂ ਮਰਦਾ ਜਿਹੜਾ ਉਹ ਕੋ ਮਨੁੱਖੀ ਹੋ ਕੇ ਮਨ ਪੈਦਾ ਹੋਇਆ ਇਹਦਾ ਨਾਸ ਹੋਣਾ ਹੀ ਹੋਣਾ ਇਸੇ ਦੇ ਵਿੱਚ ਨਹੀਂ ਦੁਆ ਨਹੀਂ ਮਰਦਾ ਦੁਆ ਕਰ ਦਊ ਦੁਆ ਜਾਂ ਸ੍ਰਿਸ਼ਟੀ ਦੇ ਹੀ ਉਹ ਲੋੜ ਲਈ ਉਹ ਬਰੋ ਜਿਹਦਾ ਹੁਕਮ ਹੈ ਵਾਪਸ ਲੈ ਲਊ ਉਹਨੂੰ ਚੁੱਪ ਕਰ ਜੂਗਾ ਉਹ ਨਾਸ ਨਹੀਂ ਹੁੰਦਾ ਉਹ ਪ੍ਰਗਟ ਗੁਪ ਤੋੜਦਾ ਸਾਡਾ ਉਹ ਕੋ ਹੁੰਦਾ ਦੁਬਾਰਾ ਪੈਦਾ ਹੀ ਨਹੀਂ ਹੁੰਦਾ ਫੇਰੇ ਲੋਕ ਚਤੁਰਦਸ ਜੋਤ ਪ੍ਰਕਾਸ਼ੀ ਲੋਕ ਚਤੁਰਦਸ ਜੋਤ ਪ੍ਰਕਾਸ਼ੀ ਚਤੁਰਦਸ 14 ਲੋਕਾਂ ਦੇ ਵਿੱਚ ਜੋਤ ਦਾ ਪ੍ਰਕਾਸ਼ ਕੀਤਾ ਕਿਵੇਂ ਕੀਤਾ ਇਹਦਾ ਮਤਲਬ ਇਹ ਨਹੀਂ ਆ ਵੀ ਉਹਦੇ ਨਾਲ ਚੱਲ ਨਹੀਂ ਨਹੀਂ ਲੋਕ ਇਹ ਜਿਹੜੇ ਸੀ ਨਾ ਸਾਰੇ ਜੀਵ ਇਹਨਾਂ ਤੇ ਬਾਜੋਤ ਨਹੀਂ ਸੀ ਜਲਦੀ ਇਹਨਾਂ ਦੀ ਜੋਤ ਬੰਦ ਸੀ ਭਰਮ ਦੇ ਅੰਡੇ ਚ ਉਦੇ ਹੁਕਮ ਨਾਲ ਬਾਹਰ ਜਿਉ ਤਾਉਣ ਲੱਗੀ ਆ ਇਹਨਾਂ ਨੂੰ ਅੱਖਾਂ 'ਚ ਤਾਂ ਦਿਖਣ ਲੱਗਿਆ ਅੱਖਾਂ ਦੇ ਵੀ ਦੀਦਾ ਜੇ ਹੋਣਾ ਹੋਵੇ ਹਾਂ ਨਾ ਕਰਨਾਂ ਤੇ ਸੁਣੇ ਨਾ ਅੱਖਾਂ 'ਚ ਦਿਖੇ ਜਿਵੇਂ ਸਿਲੰਡਰ 'ਚ ਪਾਈ ਹੋਈ ਗੈਸ ਹੋਰ ਗੱਲ ਆ ਜੇ ਉਹਦਾ ਢੱਕਣ ਖੋਲ੍ਹ ਲੀਏ ਫੇਰ ਸਾਰੇ ਫੈਲ ਜਾਂਦੀਆਂ ਬਸ ਇਦਾਂ ਦੀ ਗੱਲ ਸਮਝ ਲਓ ਜੋਤ ਬੰਦ ਹੁੰਦੀ ਹੈ ਭਰਮ ਦੇ ਅੱਡੇ 'ਚ ਜਦਾਂ ਜਰ ਹੁਕਮ ਨਹੀਂ ਹੈ ਉਹ ਬਾਹਰ ਨਹੀਂ ਜਾ ਸਕਦੀ ਹੁਕਮ ਹੋਇਆ ਕੋ ਚੇਰ ਬਾਤ ਉਹਦੀ ਜ਼ਿੰਦਗੀ ਆ ਜਦ ਨਾਲ ਜਿਹੜੀ ਜੋਤ ਬਾਹਰ ਜਾਂਦੀ ਇਹ ਪ੍ਰਕਾਸ਼ ਤਾਂ ਹੋਇਆ ਨਹੀਂ ਇਹ ਬੰਦਾ ਜਿਵੇਂ ਸਿਲੰਡਰ ਚ ਗੈਸ ਬੰਦ ਹੁੰਦੀ ਹੈ ਮੈਂ ਹੀ ਰਹਿ ਜੀਵਨ ਪ੍ਰਕਾਸ਼ ਹੁਕਮ ਨਾਲ ਹੋਇਆ ਹੋਇਆ ਇਹਨਾਂ ਨੂੰ ਲਈਦਾ ਪੱਥਰ ਸੀਗੇ ਪਏ ਕਾਲੇ ਪੱਥਰ ਪਏ ਤੇ ਦਰਜੋਸੀ ਹਕਵਾਇਆ ਜੋਤ ਪੱਥਰ ਦੇ ਬਿੱਦੀ ਬਹੁਤ ਚਮਕਣ ਲੱਗੇ ਹੀਰੇ ਵਾਂਗ ਕੇ ਚਮਕਣ ਲੱਗੇ ਕਾਲੇ ਪੱਥਰ ਹੀਰੇ ਵਾਂਗ ਕੇ ਚਮਕਣ ਲੱਗੇ ਉਹਨਾਂ ਜਿਹੜੇ ਹੀਰੇ ਨੇ ਜਿੰਨਾ ਜਿਹੜੇ ਇਹਨਾਂ ਦੀ ਜੀਵਨ ਉਹਨਾਂ ਜਿਹੜੇ ਸਰੀਰ ਨਾਲ ਨੇ ਉਹਦੇ ਬਾਅਦ ਫਿਰ ਪੱਥਰ ਦੇ ਪੱਥਰ ਹੋ ਜਾਣਗੇ ਜੜ ਹੋ ਜਾਣਗੇ ਜੜ ਰੂਪ ਦੇ ਵਿੱਚ ਹੋ ਜਾਣਗੇ ਜੜ ਵਾਂਗ ਹੈ ਜੜ ਜੋ ਵੀ ਜੜਾ ਹੁੰਦਾ ਬਰੇ ਬਰੇ ਦਿਵਸ ਤਾਂ ਜੜੇ ਹੁੰਦੀ ਹੈ ਸਰੀਰ ਵੀ ਜੜੇ ਹੋ ਵੀ ਜੜਾ ਸਰੀਰ ਨੂੰ ਸੋਨਸਵਾਦ ਦੀ ਜੜਸ ਜੜੇ ਬੇਹੋਸ਼ ਹੈ ਜਨ ਕਿ ਦੱਸੋ ਬੇਹੋਸ਼ ਉੱਠਿਆ ਪਤਾ ਕਿੱਥੇ ਸੀ چاہے ਸਾਲ ਪਰ ਬੇਹੋਸ਼ ਰਹੇ 2 ਸਾਲ ਬੇਹੋਸ਼ ਰਹੇ ਉੱਠ ਕੇ ਕਦੇ ਦੱਸਿਆ ਉਹਨੇ ਕੀ ਗੱਲ ਸੀ ਜੜ ਪੱਥਰ ਹੈ ਆਤਮਾ ਪੱਥਰ ਵਿੱਚ ਹੀ ਰਹੀ ਹੈ ਕੋਈ ਰੋਸ਼ਨੀ ਬੋਲੋ ਜੀ ਉਹ ਟਾਈਮ ਉਹਦੇ ਵਾਤੇ ਕੋਈ ਟਾਈਮ ਨਹੀਂ ਹੈ ਹਾਂ ਹਾਸ ਤੱਕ ਹੀ ਟਕੇ ਬੀਜ ਸਮਾ ਹੋ ਜੋਗੇ ਕੋਈ ਦੱਸੇ ਤਾਂ ਸਹੀ ਉੱਠ ਕੇ ਕੁਝ ਭੁੱਲ ਜਾਂਦਾ ਦੁਬਾਰਾ ਜੋ ਵੀ ਭੁੱਲ ਜਾਂਦਾ ساری ਆਦਾਸ ਖਤਮ ਹੋ ਜਾਂਦੀ ਹੈ ਜਿਵੇਂ ਆਪਾਂ ਕਿਸੇ ਚੀਜ਼ ਨੂੰ ਨਾਲ ਜੁੜੇ ਰਹੀਏ ਦੋ ਚਾਰ ਸਾਲ ਬਾਅਦ ਭੁੱਲ ਜਾਂਦੀਆਂ ਨਾ ਕਿੰਨੀਆਂ ਗੱਲਾਂ ਆਪਾਂ ਭੁੱਲ ਜਾਂਦੇ ਛੇਤੀਓ ਭੁੱਲ ਜਾਂਦੀਆਂ ਕਈ ਗੱਲਾਂ ਆਵਰ ਸਭ ਜਾਂਦੇ ਨੂੰ ਸਭ ਕੁਝ ਹਸਤਕੀਟ ਕੇ ਵਿੱਚ ਸਮਾਨਾ ਹਸਤਕੀਟ ਕੇ ਵਿੱਚ ਸਵਰਨ ਕੀ ਸੁਆਣਾ ਇੱਕ ਹੈ ਜਿਹੜਾ ਇੱਕ ਦੀ ਗੱਲ ਚਲਦੀ ਆ ਜਿਹੜਾ ਦੀ ਗੱਲ ਚਲਦੀ ਏ ਐ ਸੰਸਾਰ ਜਿਹੜਾ ਇੱਕ ਹੈ ਗੱਲ ਤਾਂ ਇੱਕ ਦੀ ਜਲਦੀ ਆ ਪਰ ਉਹ ਦੀ ਨਾ ਸੰਸਾਰ ਦੇ ਵਿੱਚ ਉਹ ਯਤਕੀਟ ਕੇ ਵਿੱਚ ਕੀ ਦੇ ਵਿੱਚ ਚਾਹੇ ਹਾਥੀ ਦੇ ਵਿੱਚ ਜੇ ਅਸੀਂ ਉਹਦੀ ਇਹ ਗੱਲ ਨਾ ਕਰੀਏ ਨਾ ਵੀ ਜਿਹੜਾ ਸੰਸਾਰ ਚ ਕਹ ਉਹਦੀ ਗੱਲ ਹੈ ਤਬ ਲਿਖਾ ਹੋਰ ਭੇਜੂਗਾ ਆਹੀ ਬਲਿਖਾ ਤਾਂ ਬਲਿਖਾ ਹੋਰ ਦੀ ਗੱਲ ਚੱਲ ਰਹੀ ਹੈ ਦੋ ਹੰਸ ਕੀੜ ਕੇ ਵੀ ਸਮਨ ਹਾਤੀ ਦੇ ਵਿੱਚ ਵੀ ਇੱਕੋ ਹੀ ਹੈ ਕੀੜੀ ਚ ਵੀ ਇਹਨਾਂ ਦੇਖੋ ਵੀ ਹਾਥੀ ਬੜਾ ਉਹ ਚ ਪੰਜ ਸੱਤ ਟੋੜ ਉਜਾਜ਼ ਮਾਂ ਮਾਂ ਜਦਾ ਹੋਣ ਗਿਆ ਕੀੜੀ ਚੱਕਾ ਉਸ ਵੀ ਕਾਦਮ ਉਸ ਵੀ ਕਾਦਮ ਆਤਮਿਕ ਕਰ ਹੋਗੀ ਦੋਜੇ ਕੋਈ ਵਰਗ ਨਿਜਮੀ ਜਮਾ ਕੇ ਵਿਖੇ ਇਸ ਬਸਤ ਇੱਕ ਜੋਤ ਹੈ ਵੜ ਹੈ ਨਾ ਘਾਟ ਹੈ ਹਾਂ ਘਾਟ ਵੜ ਕੀ ਹੈ ਜਾਗਦਾ ਕੰਨਾ ਸੁੱਤਾ ਕੰਨਾ ਪਿਆ ਬਸ ਇਹ ਘਾਟ ਜਾਗਣ ਸਾਉਂਡ ਦੀ ਦਾ ਘਾਟ ਹੈ ਹੋਰ ਕੋਈ ਘਾਟ ਵਾਦ ਕਿ ਇਹ ਤਾਂ ਤਾਂ ਗਿਆਨੀ ਗੱਲ ਹੈ ਬਚਰਾ ਬਚਰਾ ਆਦਮ ਨੂੰ ਵੀ ਚਲਾ ਕੇ ਤੁਸੀਂ ਮਾਰਦੇ ਹੱਥ ਦੂਰ ਅਸੀਂ ਡੇਲ ਜਾਂਦੇ ਸਹੀ ਰਾਵ ਰੰਗ ਜੇ ਇੱਕ ਸਰਜਨ ਰਾਵ ਰਾਜਾ ਰੰਗ ਕੋ ਨਹੀਂ ਬੋਤਾ ਫਰਕ ਹੈਗਾ ਇੱਕ ਸਰਜਨ ਆਉਂਦੀ ਹੈ ਜਲਬ ਲੈਂਦੀ ਆ ਉਦੋਂ ਰਾਜਾ ਰਾਮ ਕੀ ਕੋਈ ਉਦਾਰ ਨਹੀਂ ਹੈਰਾ ਆ ਰਾਮ ਜੋਤ ਬਾਸ ਤੇ ਕੋਈ ਫਰਕ ਨਹੀਂ ਹੈ ਰਾਹ ਬਲਕੋ ਹੱਥ ਕੀੜ ਕੇ ਵੀ ਸਵੰਨ ਹੁਕਮ ਵੀ ਹੱਥ ਕੀੜ ਦੇ ਵਿੱਚ ਹੈ ਸਾਰਿਆਂ ਦੇ ਹੁਕਮ ਵੀ ਉਦਾਰ ਹੈ ਸਾਰਿਆਂ ਦੇ ਰਾਜਾ ਜੀ ਵੀ ਰੰਗ ਦੇ ਵਿੱਚ ਵੀ ਹੋ ਕੋ ਦੇਖੋ ਨਾ ਹੁਕਮ ਸਾਰਿਆਂ ਦੇ ਵਿੱਚ ਸਮਾਇਆ ਜਿੱਥੇ ਜੋਤ ਹੈ ਹੁਕਮ ਉਥੇ ਨਾਲ ਹੈ ਉਕੇ ਡਿਵੈਲਪਮੈਂਟ ਜੋ ਹੋਗੋ ਨਾ ਕਰਨ ਉਰੂ ਸਦਾਰ ਅਛਾ ਹਮਨੇ ਕਿਹਾਦਾ ਹੈ ਸਰ ਬਡੀਗਾਰ ਰਹੂਗਾ ਨਾ ਰੱਖਿਆ ਕਰਨ ਵਾਲਾ ਨਾਲ ਹੀ ਰਹੂ ਤਾਂ ਫਿਰ ਰੱਖਿਆ ਕਰਨ ਕਰੂਗਾ ਉਹਦੀ ਰਖਸ਼ੂਕ ਵੀ ਨਾਲ ਜੋ ਜਿੱਥੇ ਜੋ ਦਾ ਰਖਸ਼ਕ ਬਡੀਗਾਰ ਨਾਲ ਆ ਉੱਥੇ ਉਹਦੇ ਚਾਹੇ ਹਾਥੀ ਦੇ ਵਿੱਚ ਹੈ ਚਾਹੇ ਕੀੜੀ ਵਿੱਚ ਇਹ ਨਹੀਂ ਵੀ ਹਾਥੀ ਦਾ ਚਾਹ ਲਾਪੇ ਰੱਖਿਆ ਕਰ ਲੂਗਾ ਆਪਣੀ ਖਤਰਾ ਦਾ ਕੀੜੀ ਰੂ ਵਾਰਡੀ ਗਾਰਡ ਵੀ ਨਾਲ ਹੈ ਜਿੱਥੇ ਜੋ ਤਾਂ ਉੱਥੇ ਬਾਡੀਗਾਰਡ ਡਿਵੈਲਪਮੈਂਟ ਕਰਨ ਵਾਲਾ ਉੱਥੇ ਨਾਲ ਹੈ ਸਤਗੁਰ ਮੇਰਾ ਸਦਾ ਸਦਾ ਨਾਮ ਹੈ ਸਦਾ ਸਦਾ ਦਾ ਮਤਲਬ ਹੈ ਸਦਾ ਹੀ ਨਾਲ ਰਹਿੰਦੇ ਗੁਰ ਮੇਰਾ ਸੰਗ ਸਦਾ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਉਹ ਸਦਾ ਰੱਛਾ ਹੰਗਦੇ ਹੈ ਸਾਰੇ ਚਾਹ ਉਹ ਨਹੀਂ ਗੁਰ ਕੀ ਗੁਰ ਗਿਆਨ ਸਰੂਪ ਹੈ ਸ਼ਬਦ ਹੈ ਗੁਰ ਸ਼ਬਦ ਹੈ ਸ਼ਬਦ ਗੁਰੂ ਹੈ ਨਾ ਉਹ ਹੁਕਮ ਨਾਲ ਹੀ ਹੈ ਸਾਰਿਆਂ ਦੇ ਅੰਤਰਾਤਮਾ ਪੁਰਖ ਅਭਿਗਾਮੀ ਅਦਵਾਇ ਪੁਰਖ ਅਦਵਾਇ ਪੁਰਖ ਕਹਿੰਦੇ ਅਦਵਾਇ ਅਲਖ ਪੁਰਖ ਅਭਿਗਾਮੀ ਹਾਂ ਹੈ ਇਹ ਰੀਆ ਮੇਰਾ ਹੈਗਾ ਮੇਰਾ ਨਹੀਂ ਹੈ ਆ ਚੰਗਾ ਆ ਵਾੜਾ ਲੋਈ ਰਾਵ ਰੰਗ ਜੇ ਇੱਕ ਸਰ ਜਾਣ ਅਦਵਾਏ ਕੇ ਵਿੱਚ ਸਮਾ ਹਸਤ ਉਹਦੇ ਉਹਦੇ ਸਾਰੇ ਹੀ ਨੇ ਉਹਦੇ ਸਾਰਿਆਂ ਦੀ ਰਾਖੀ ਕਰਦੀਏ ਕੋਈ ਦੁਆ ਦੁਆਇ ਤਰੀਜ਼ ਦੋਲੇਵਿਚ ਦੂਜਾ ਉਹਦੇ ਸਾਰੇ ਹੀ ਨੇ ਦੂਜਾ ਕੌਣ ਉਹਦੇ ਵਾਸਤੇ ਦੂਜਾ ਕੋਈ ਨਹੀਂ ਸਾਡੇ ਵਾਸਤੇ ਦੂਜਾ ਹੋਊਗਾ ਅਲਖਪੁਰਖ ਅਭਗਾਮੀ ਅਲਖਪੁਰਖ ਅਲਖਪੁਰਖ ਬੁੱਧ ਦਿਖਾਵਾਂ ਇਹ ਗੈਲੋ ਤੁਸੀਂ ਸਾਡੇ ਕਿ ਜਿਹੜੇ ਗਿਆਨ ਅੰਦਰ ਹੈ ਯਾਰ ਬੁੱਧੀ ਹੈ ਅਸਲ ਤੇ 6 ਨੇ ਸਾਡੇ ਕੋਲ ਪਾਵਰ ਪੰਜ ਕਹਿੰਦੇ ਨੇ ਉਹ ਪੰਜਾਂ ਹੀ ਖਾਮੋ ਕੌਣ ਕਰਦਾ ਜਿਹੜਾ ਖਾਮੋ ਕੌਣ ਕਰਦਾ ਤੇ ਛੱਡਦਾ ਪੰਜ ਤਾਲੇ ਹਥਿਆਰ ਨੇ 6 ਡਾਕਟਰ ਆਪ ਹੈ ਜੇ ਡਾਕਟਰੋਂ ਵੀ ਹਥਿਆਰ ਕੀ ਕਰਕੇ ਉਹ ਪ੍ਰੈਜ਼ੀਡੈਂਟ ਡਾਕਟਰ ਨੇ ਗੱਲ ਨਾ ਕੋ ਹਥਿਆਰ ਨਾ ਕਰਨਾ ਠੀਕ ਆ ਹਥਿਆਰ ਨਾਲ ਪ੍ਰਸ਼ਨ ਹੋਊਗਾ ਇਹ ਗੱਲ ਠੀਕ ਹੈ ਪਰ ਡਾਕਟਰ ਦੇ ਮੈਨ ਕਿਵੇਂ ਹੋਊਗਾ ਇਸ ਨੇ ਬੁਖਾਰ ਵੀ ਪੰਜ ਬੰਨੇ ਗਿਆਨ ਦੋ ਜਿਹੜਾ ਕੰਮ ਕਰਨ ਵਾਲਾ ਗਿਆ ਨੀਦਰਾ ਜੋ ਛੱਡ ਦਿੱਤਾ ਉਹ ਤੇ ਛੱਡਦਾ ਠੀਕ ਹਾਂ ਛੇਕਾਰ ਛੇਗੁਰ ਛੇ ਉਪਦੇਸ ਛੇ ਸ਼ੇਨ ਗਿਆਨਦਰੇ ਛੇ ਨੇ 537 ਬੁਕਾਰ ਵੀ ਛੇ ਨੇ ਜੇ ਗੱਲ ਫालतू ਨਾ ਹੁੰਦੀ ਤਾਂ ਫਿਰ ਸਾਡਾ ਧਰਮ ਦਾ ਫालतੂ ਹੈ ਇਹ ਜੜ ਤੱਕ ਸੀਮਤ ਨਾ ਦੂਏ ਤਰਮ ਸਰੀਰ ਤੱਕ ਸੀਮਤ ਨਾ ਇਹਦਾ ਮਤਲਬ ਹੈ ਇਹਨਾਂ ਨੇ ਤਨ ਚੋਂ ਮੰਨ ਨਹੀਂ ਦੇਖਿਆ ਜੇ ਤਨ ਚੋਂ ਆਤਮਾ ਦੇਖ ਲੈਂਦੇ ਤਾਂ ਛੇਵੇਂ ਦਾ ਪਤਾ ਲੱਗਦਾ ਸੜਕਾ ਸਦਨ ਨਰ ਨਾਲ ਦਾ ਮੁਣੀ ਸੇਖਾ ਸੇਖਾ ਤੇਰੀ ਵੀ ਤਾਲਬੇ ਬਣ ਨਹੀਂ ਸੇਖਾ ਜੇ ਵੇਖ ਲੈਂਦੇ ਛੇ ਨਾ ਕਹਿੰਦੇ ਹੋਵੇ ਦਿਮਾਗ ਦੇ ਥਰੂ ਅੱਖਾਂ ਚਲਦੀਆਂ ਨੇ ਦਿਮਾਗ ਦੇ ਥਰੂ ਕੰਦ ਚਲਦੇ ਨੇ ਦਿਮਾਗ ਦੇ ਥਰੂ ਸਭ ਨਾਲੇ ਤੇਰੀ ਕਹੀ ਜਾਂਦੇ ਨੇ ਉਹ ਤੇਰੀ 'ਚ ਬੈਠ ਕੇ ਤਾਂ ਸਰੀਰ ਤੇ ਕੰਟਰੋਲ ਕਰਦਾ ਉਹ ਕੌਣ ਕਰਦਾ ਉਹ ਕੂੜਿਆਰਾ ਕਰਦਾ ਸੱਚਿਆਰਾ ਨਹੀਂ ਹੈਗਾ ਕੂੜਿਆਰੇ ਦਾ ਕਬਜ਼ਾ ਇੱਥੇ ਇਹਦਾ ਕੂੜਿਆਰੇ ਨੂੰ ਨਹੀਂ ਜਾਣਦੇ ਕੂੜਿਆਰੇ ਸੱਚਿਆਰੇ ਨੂੰ ਕੀ ਜਾਣਣ ਇਹਨਾਂ ਨੂੰ ਤਾਂ ਆਪਣੇ ਆਪ ਦਾ ਵੀ ਪਤਾ ਨਹੀਂ ਕੂੜਿਆਰੇ ਦਾ ਆਪ ਇਹ ਆਪਣੇ ਆਪ ਨੂੰ ਨਹੀਂ ਜਾਣਦੇ ਜੋ ਆਪ ਦੇ ਗਹਾਂ ਨੂੰ ਤਾਂ ਕੀ ਜਾਣਣ ਉਹ ਗਾਹਾਂ ਵਾਲਾ ਤਾਂ ਬਾਪ ਐ ਰੋਜੀ ਜੋ ਪੈਦਾ ਹੋਏ ਰੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਮਾਤਾ ਪਿਤਾ ਨੂੰ ਦਾ ਜਾਣਨ ਪਹਿਲਾਂ ਪੁੱਤ ਨੂੰ ਜਾਣਨ ਲਿਏ ਸ਼ਰੀਰ ਨੂੰ ਪੁੱਤ ਜਾਣਦੇ ਨੇ ਉਹ ਜੀ ਮਾਤਾ ਪਿਤਾ ਬਣਾ ਹੀ ਹੋਈ ਹਰ ਰੂਪ ਜਾਣਦੇ ਕਿਉਂਕਿ ਆਪ ਸ਼ਰੀਰ ਐ ਰੋ ਜਿਹੜੇ ਆਪ ਨੂੰ ਸ਼ਰੀਰ ਮੰਨਦੇ ਨੇ ਉਹ ਮਾਤਾ ਪਿਤਾ ਬਾਹਰ ਬਿਸ਼ਰੀ ਵਾਲੇ ਮੰਨਦਾ ਪਿਤਾ ਬਣਾਏ ਰੇ ਰਾ ਇਹਨਾਂ ਨੂੰ ਆਪਣਾ ਪਤਾ ਐ ਨਾ ਇਹਨਾਂ ਨੂੰ ਆਪਣੇ ਮਾਤਾ ਪਿਤਾ ਦਾ ਪਤਾ ਇਹ ਇਸਨ ਜੋਧਰ ਗੀਤਾ ਗੁਰਮੁਖੀ ਨੇ ਤੂੰ ਮੇਰਾ ਪਤਾ ਤੂੰ ਹੈ ਮੇਰਾ ਮਾਤਾ ਇਸੇ ਕਰਕੇ ਇਤਿਹਾਸ ਤੇ ਖੜੇ ਨੇ ਇਸੇ ਕਰਕੇ ਡੀਗਾਂ ਚ ਬਹਾਲੀ ਗੱਲਾਂ ਕਰਦੇ ਨੇ ਇਸੇ ਕਰਕੇ ਨੇਤਰਾ ਨੂੰ ਅੱਖਰ ਸਮਝ ਲਿਆ ਨਾ ਨੇ ਇਸੇ ਕਰਕੇ ਕਾਰਣਾ ਨੂੰ ਕੰਨ ਸਮਝ ਲਿਆ ਨਾ ਨੇ ਇਸੇ ਕਰਕੇ ਜਿਹਬਾ ਨੂੰ ਜੀਬ ਸਮਝ ਲਿਆ ਨਾ ਨੇ ਰਸਨਾ ਨੂੰ ਜੀਬ ਸਮਝ ਲਿਆ ਜੜ ਬੁੱਧੀ ਯਾਰੋ ਚੇਤਨ ਨੂੰ ਤਾਂ ਜਾਣਦੇ ਹੀ ਨਹੀਂ ਇਹ ਚੇਤਨ ਦੀ ਗੱਲ ਕਰੀਏ ਕਹਿੰਦੇ ਤੁਸੀਂ ਤਾਂ ਪੜਨ ਦੋ ਪੜਨ ਤੁਸੀਂ ਉਹ ਪੜਨ ਜਿਹੇ ਤੈਨੂੰ ਛੱਡ ਗਿਆ ਸੀ ਇਹਨਾਂ ਨੂੰ ਇਹ ਨਹੀਂ ਪਤਾ ਪੜਨ ਤੇ ਦਾ ਚੇਤਨ ਤਾਂ ਛੱਡਤੀ ਸੀ ਜੜ ਤੇ ਆ ਗਿਆ ਸੀ ਇੱਥੋਂ ਹੀ ਪੜਤ ਪਾੜੀ ਬਾੜ ਕਿਹਾ ਹੋਇਆ ਬੇੜ ਇਹ ਅਰਥ ਜੜ ਵਾਲੇ करते ਸੀ ਇਹ ਪੰਡਤ ਦੇ ਕੀਤੇ ਅਰਥ ਨੇ ਇਹਨਾਂ ਨੂੰ ਇਹ ਨਹੀਂ ਪਤਾ ਪੰਡਤ ਬਹੁਤ ਖਲਾਫ ਨੇ ਪੈਸੇ ਨਫ਼ਰਤ ਕਰਦੇ ਨੇ ਪਰ ਚੇਲੇ ਪੰਡਤ ਦੇ ਹੀ ਨੇ ਕਿਉਂਕਿ ਨਫ਼ਰਤ ਤਾਂ ਗੁਰਬਾਣੀ ਨਹੀਂ ਸਿਖਾਉਂਦੀ ਪੰਡਤ ਸਿਖਾਉਂਦਾ ਹੈ ਪੰਡਤ ਦੇ ਚੇਲੇ ਨਫ਼ਰਤ ਹੈਗੀ ਦੁਆਇਤ ਇਹਨਾਂ ਕੋ ਦੁਆਇਤਾ ਨਫਰਤੋਂ ਪੜਨਦੇ ਚੇਲੇ ਨੇ ਪੜਨਦੇ ਦੁਆਇਤਾ ਨਫਰਤ ਹੈ ਗੁਰਬਾਣੀ ਕੋ ਤਾਂ ਦੁਆਇਤਾ ਪੜਨ ਸਵਾਲੇ ਮੈਨਾਂ ਨਹੀਂ ਉਦ ਇਹ ਤਾਂ ਮਟੋਲਦੀ ਹੈ ਦੁਰਪਾਵਲੂ ਇਹਨਾਂ ਦੁਰਪਾਵਲੋਂ ਸੇ ਕੱਪੜਾ ਕਿੱਥੋਂ ਆਈਏ ਪੜਨਦਾ ਤਾਂ ਆਈਏ ਪੜਨਦੇ ਇਹਨਾਂ ਅਰਥ ਪੜਨ ਤਾਂ ਕੀਤੇ ਨੇ ਸਭ ਸਭ ਇਹੋ ਅਰਥ ਕਰਦਾ ਆਮੇ ਵੀ ਦੁਆਇਤ ਪਾਬਰ ਨਹੀਂ ਸੀ ਸਮਝਦਾ ਸੀ ਪਰ ਅਰਥ ਨਹੀਂ ਸਮਝ ਸਕਿਆ ਉਹ ਸਭ ਨਹੀਂ ਦੇ ਸਕਿਆ ਕਿ ਕਿੱਥੇ ਕੁੱਕ ਗਏ ਸੀ ਕਿੱਥੋਂ ਰਾਹ ਪਾੜ ਲਿਆ ਪੜਨ ਤਨੇ ਹਾਲਾਂਕਿ ਕਵੀਨ ਨੇ ਇਸ਼ਾਰਾ ਕੀਤਾ ਸੀ ਪੜਨ ਪਾੜੀ ਬਾੜ ਪਾਨ ਬੋੜੀ ਪ੍ਰਥਵੀ ਪੜਨ ਤ ਪਾੜੀ ਬਾੜ ਪਾਨ ਨਾ ਪੱਥਰ ਪੂਜਾ ਪੱਥਰ ਪੂਜਾ ਕਰ ਲਿਆ ਹੀ ਸਰੀਰ ਦੀ ਸਰੀਰ ਹੈ ਤੇ ਪੱਥਰ ਪੂਜਾਈ ਆਤਮਾ ਮਾਰੇ ਪੱਥਰ ਰੱਖੋ ਕਿਹੜਾ ਰਖ ਲੋਗੇ ਆਤਮਾ ਦੀ ਫੋਟੋ ਬਣਾ ਕੇ ਮੈਂ ਵੜ ਜੂਗੀ ਆਤਮਾ ਦੀ ਮੂਰਤੀ ਬਣਾ ਕੇ ਮੈਂ ਵੜ ਜੂਗੀ ਜਿਨ੍ਹਾਂ ਨੇ ਆਧਵਾ ਨੂੰ ਮਨੈ ਮੂਰਤੀ ਬਣਾਈ ਰਹੀ ਸਕਦੀ ਆਧਵਾ ਦੀ ਦੀ ਉਹ ਨਹੀਂ ਜਦ ਕਵੇਂ ਬੜ ਜੂਗੀ ਮੂਰਤੀ ਸਰੀਰ ਨੂੰ ਦੇਖਣ ਵਾਲੇ ਸਰੀਰ ਤੇ ਖੜੇ ਸੀ ਉਹ ਮੂਰਤੀ ਪੂਜਾ ਉਹੀ 10 ਗੁਰੂਵੰਦਨ ਕਸ ਕਹਿੰਦਾ ਇੱਕ ਵਾਰ ਤਾਂ ਕਹਿੰਦਾ ਜੋਤਕ ਇੱਕ ਵਾਰ ਕਹਿੰਦਾ ਗੁਰੂदास ਨੇ ਪੜਨਦੇ ਕੇਲੇ ਜੋ ਹੈ ਚੇਲੇ ਜੋ ਪੜਨਦੇ ਹੋਏ ਗੁਰੂ ਵੀदास ਨੇ ਜੋਤ ਵੀ ਕ ਇੱਕ ਫਿਰ ਸ਼ਬਦ ਗੁਰੂ ਹੈ ਉਹ ਕਹਵੇ 11ਵਾਂ ਇੱਕ ਗ੍ਰੰਥ ਗੁਰੂ ਹੈ ਉਹ ਕਹਵੇ ਇੱਕ ਖਾਲਸਾ ਗੁਰੂ ਹੈ ਉਹ ਕਹਵੇ ਗੁਰੂਆਂ ਦੀ ਪੂਰੀ ਮੰਡੀ ਲੱਗੀ ਅਸਲੀ ਕਿਹੜਾ ਵਝਾਣੇ ਨਹੀਂ ਹੁਣ ਅਖਰਾਂ ਨੂੰ ਸ਼ਬਦ ਗੁਰੂ ਕਹਤਾ ਸ਼ਬਦ ਕੰਨਾਂ ਦਾ ਵਿਸ਼ਾ ਹੈ ਸੁਣਨ ਵਾਲਾ ਕੰਨਾਂ ਨੂੰ ਸੁਣਨ ਵਾਲੇ ਸ਼ਬਦ ਰੂਵੀ ਗੁਰੂ ਨਹੀਂ ਬਣੇ ਹੋਏ ਉਣੀ ਤੁਰਕੀ ਬਾਣੀ ਹੈ ਉਹ ਉਹ ਕਹੇ ਵਾਹ ਵਾਹ ਬਾਣੀ ਦਰਕਾਰ ਹੈ ਉਹ ਤਾਂ ਬੋਲਿਆ ਹੋਇਆ ਜਿਹੜਾ ਸ਼ਬਦ ਬਾਹ ਹੈ ਉਹ ਕਹਿਆ ਬਾਹ ਹਵਾ ਮਾਇਆ ਹੈ ਜੇ ਬਾਹ ਰਿਕਾਰਡ ਹੋ ਜਾਂਦੀ ਹੈ ਇਹ ਗੁਰੂ ਰਈ ਹੈ ਇਹ ਗੁਰਦੇਵ ਹੈ ਗੁਰੂ ਜੀ ਹਾਂ ਇਹ ਜਿਹੜਾ ਗਿਆਨ ਹੈ ਰੜਕਿਆ ਹੈ ਵਖੜ ਉਹਨੂੰ ਗੁਰੂ ਜਰੂਰ ਕਿਹਾ ਹੈ ਜੇ ਬਿਲਜੁਬੇ ਕਿਸੇ ਨੂੰ ਸ਼ੁੱਧ ਉਹ ਕੇ ਭਾਵੇਂ ਜੋ ਵਖੜ ਜੇ ਕੋਈ ਸਮਝ ਲੈਣਾ ਮਖੜ ਤਤ ਜਿਹੜਾ ਤਤ ਉਹ ਜ਼ਰੂਰ ਗੁਰੂ ਉਹ ਜ਼ਰੂਰ ਗੁਰੂ ਗਿਆਨ ਗੁਰੂ ਉਹ ਤਤ ਹੈ ਉਹ ਕੀ ਹੈ ਉਹ ਆਤਮਾ ਨੂੰ ਦਾ ਦਰਸ਼ਨ ਕਰਾਉਂਦਾ ਉਹ ਕਰਾਉਂਦਾ ਆਤਮਾ ਦਾ ਦਰਸ਼ਨ ਉਹ ਕੇ ਗੁਰੂ ਆਤਮਾ ਸਰੀਰ ਤੋਂ ਅੱਗੇ ਲੈ ਜਾਂਦਾ ਹੈ ਆ ਗੁਰੂ ਕੇ ਹੋਇਆ ਸਭ ਘਟ ਘਟ ਕੇ ਅੰਤਰਜਾਮੀ ਸਭ ਘਟ ਘਟ ਕੇ ਅੰਤਰਜਾਮੀ ਹੁਣ ਘਟ ਕੇ ਹਿਰਦੇ ਚ ਦੇਖਣ ਹਿਰਦੇ ਦੇ ਵਿੱਚ ਆਹੋ ਸਰੀਰ ਤਾਂ ਹੈ ਨਹੀਂ ਘਟ ਦੇ ਵਿੱਚ ਜੇ ਦੇਖਣਾ ਉਹ ਕਿਹੜੀ ਅੱਖ ਨਾਲ ਦੇਖਊ ਸਾਰਿਆਂ ਘਟਾਂ ਦੇ ਵਿੱਚ ਅੰਤਰਜਾਮੀ ਹੈ ਅਲਖ ਰੂਪ ਅਛੈ ਅਭੀ ਗੱਲ ਨੂੰ ਜਾਣਣ ਵਾਲਾ ਹੈ ਕਿ ਅੰਦਰ ਜੋ ਬੈਠਾ ਸਭ ਦੇ ਅਲਖ ਰੂਪ ਅਛੈ ਅਨਪੇਖਾ ਉਹ ਅੰਤਰਜਾਮੀ ਕੇ ਬਰੇ ਉਹਨੇ ਦਰਦੇ ਦੇ ਨੱਥ ਪਾਈ ਹੋਈ ਹੈ ਜਿਹੜਾ ਸ਼ਰੀਰ ਨੂੰ ਚਲਾਉਂਦਾ ਨੱਥ ਉਹਦੇ ਹੀ ਪਾਈ ਹੋਈ ਹੁੰਦੀ ਜਿਹੜਾ ਡਰਾਈਵਰ ਹੁੰਦਾ ਨਾ ਗੱਡਾ ਗੱਡੀ ਤੇ ਰੇੜੀ ਤੇ ਆ ਬੈਠਾ ਬੁੱਲਦਾ ਨੇ ਆ ਟਾਂਗੇ ਦੇ ਉੱਤੇ ਬੈਠਾ ਇਹ ਕੋਹੜੇ ਦੇ ਬੈਠਾ ਉਹ ਕੋਲੇ ਦੇ ਜਿਹੜਾ ਸਿਆਣਾ ਬੰਦਾ ਨਾ ਬੋਲਦਾ ਨਾ ਬੇਟਾ ਉਹ ਪਛਾਣ ਲੈਂਦਾ ਵੀ ਬੋਲਦਾ ਤੇ ਆਖਣ ਇਹ ਰਸਤੇ ਬੁੜਲਦੀ ਹੈ ਉਹ ਪਹਿਲਾਂ ਹੀ ਰਸਾ ਖੇਡਦਾ ਦਮਿਆਂ ਰੂੜੀ ਆਲੇ ਰੂਜਣ ਉਹਨਾਂ ਦੀ ਜਾਣਦਾ ਹੁੰਦਾ ਵੀ ਜੇ ਨਾ ਮੈਂ ਹਲਾਇਆ ਇਹਨੂੰ ਨਾ ਚਲੇ ਜਾਣ ਇਹ ਰੋਜ਼ ਇਹ ਰਸਤੇ ਜਾਂਦੇ ਨੇ ਨਾ ਆਦੇਦ ਨੂੰ ਮੈਂ ਲੈ ਕੇ ਨਹੀਂ ਜਾਂਦੇ ਵੇ ਇਹਨੂੰ ਲੈ ਕੇ ਜਾਂਦੇ ਨੇ ਉਹ ਪਹਿਲਾਂ ਹੀ ਚੌਕਸ ਹੋ ਜਾਂਦਾ ਰਸੇ ਖਿੱਚ ਲੈਂਦੇ ਮ ਜਿਹੜਾ ਉਹਨੇ ਕੰਮ ਕਰਾਉਣਾ ਪਹਿਲਾਂ ਹੀ ਡੋਰ ਖਿੱਚ ਲੈਂਦਾ ਵੀ ਇਹ ਨਹੀਂ ਜਾਣਾ ਇਹ ਜਾਣੇ ਜੇ ਸੋਝਵੇਂ ਰਸੇ ਰੱਖ ਕੇ ਫੇ ਬੋਰ ਜਿੱਦ ਨੂੰ ਮਰਜੀ ਲੈ ਜਾਣ ਫਿਰ ਕੀ ਐ ਫੇ ਜੇ ਬੋਰ ਦੀ ਜਗਾ ਝੋਟਾ ਬੜਿਆ ਹੋਵੇ ਜਦੋਂ ਪਤਾ ਲੱਗੂ ਜਾਂ ਟੋਪੇ ਗੱਡਾ ਤਲ ਲੱਗ ਜਾਊਗਾ ਜਾ ਕੇ ਛੱਪੜੇ ਫੜ ਜਾਣ ਉਹਨਾਂ ਦੇ ਉਹਦਾ ਜਦੋਂ ਪਤਾ ਲੱਗੂ ਪਾਣੀ ਲੱਗੂ ਉਹ ਪਿੱਛੋਂ ਵੀ ਕਿੱਥੇ ਆਵੜੇ ਇਸ ਕਰਕੇ ਡਰਾਈਵਰ ਜਿਹੜਾ ਨਾ ਪਾਤਣੀ ਰਹੇ ਸੁਚੇਤ ਸੁਚੇਤ ਬੇੜੇ ਕੋ ਕੱਪਰ ਕਿਆ ਕਰੇ ਉੱਪਰ ਕਿਆ ਕਰੇ ਜੋ ਪਾਤਣੀ ਰਹੇ ਸੁਚੇਤ ਇਹਨੂੰ ਸੁਚੇਤ ਰਹਿਣਾ ਪੈਂਦਾ ਬਾਤਣੀ ਨੂੰ ਵੀ ਜੇ ਸੁਚੇਤ ਉਦਰਣਾ ਸੁਚੇਤ ਤਾਂ ਸੌਂਦਾ ਤਾਂ ਨਹੀਂ ਸੌਂਦਾ ਉਹਨੂੰ ਪਤਾ ਵੀ ਗੱਡਾ ਕਿਹਦੇ ਟੋਪੇ ਚੜਾ ਲੈ ਬੜੇ ਇਹ ਸੌਂ ਤਬ ਨਹੀਂ ਦਿਵਾਰ ਕਰਦਾ ਉਹਨੂੰ ਕੀ ਪਤਾ ਕਦ ਉੱਠ ਖੜੇ ਉਹ ਇਜ਼ ਹੁੰਦਾ ਸਤਿਗੁਰ ਜਾਗਦਾ ਹੈ ਦਿਓ ਪੂਲੀ ਬਗੜਣੀ ਏ ਉਹ ਉਹ ਜਾਗਦਾ ਜਾਗਤ ਜੋਤ ਜਪਾਇਦੇਸ ਬਸਰ ਉਸੇ ਨੂੰ ਜਪਣਾ ਉਸੇ ਨੂੰ ਜਾਣਣਾ ਜਾਗਤ ਜੋਤ ਨੂੰ ਜਿਹੜੀ ਜਾਗਦੀ ਰਹਦੀ ਹੈ ਜੋਤ 부ਜੀ ਜੋਤ ਨਹੀਂ ਜਪੀਦੀ ਹੁੰਦੀ 부ਜੀ ਜੋਤ ਤੇ ਕੀ ਲੈਣਾ ਜਗਦੀ ਜੋਤ ਰੋਸ਼ਨੀ ਦਊ ਤੁਹਾਨੂੰ 부ਜੀ ਜੋਤ ਰੋਸ਼ਨੀ ਦਿੰਦੀ ਹੁੰਦੀ ਹੈ ਲੈਣੀ ਰੋਸ਼ਨੀ ਏ 부ਜੀ ਜੋਤ ਤੇ ਕੀ ਲੈਣਾ ਅਸਾਂ ਤਾਂ ਦੀਵੇ ਆਪਣੇ ਮੁਝੇ ਇਹਨਾਂ ਵਿਚਾਰਿਆਂ ਦੇ ਦੂਰੇ ਰੱਖੀ ਜਾਣ ਲਗੇ ਉਹ ਜਿਹਦਾ ਦੀਵਾ ਆ ਬੁਝਿਆ ਹੋਇਆ ਤੁਸੀਂ ਦੂਰੇ ਰੱਖੀ ਜਾਣ ਲਗੇ ਤੇ ਜਾਗ ਤੇ ਜੋਤ ਕੋਲ ਜਾਈਦਾ ਹੁੰਦਾ ਜਿੱਥੋਂ ਰੋਸ਼ਨੀ ਮਿਲੇ ਕੁਛ ਉਹਦਾ ਆ ਬੁਝਾਈ ਬੈਠੇ ਰਹੇ ਥੋੜਾ ਫੂਕ ਮਾਰ ਅਕਲ ਦੀ ਕਰੋਗੇ ਫੂਕ ਮਾਰ ਕੇ ਦੀਵਾ ਬੁਝਾ ਦੇਣਗੇ ਕਹਿੰਦੇ ਨਾ ਨਾ ਇਹ ਗੱਲਾਂ ਨਹੀਂ ਕਰੀਦੀ ਹਾਂਜੀ ਅਲਖ ਰੂਪ ਐਸਾ ਰੂਪ ਹੈ ਜਿਹੜਾ ਗਾਰੇਦਰਾ ਤੋਂ ਫਰੇ ਅਲਖ ਰੂਪ ਤੀਜੀ ਅਖਰਾਂ ਨਾਲ ਦੇਖਿਆ ਜਾਂਦਾ ਜੋ ਅਲਖ ਚੀਜ਼ ਹੈ ਨਾ ਬਵੇਕ ਬੁੱਧੀ ਨਾਲ ਸਭ ਉਹਦੇ ਸਮਝੇ ਆਉਂਦੀ ਹੈ ਦੇਖਣ ਨਾਲ ਉਹਦੀ ਸਮਝ ਆ ਜਾਂਦੀ ਕੋਈ ਅਨਪੇਖਾ ਅਨਪੇਖਾ ਕੋਈ ਵੇਖ ਨਹੀਂ ਹੈ ਵੇਖ ਰਹੇ ਹਤੇ ਅੱਛਾ ਹੈ ਅਨਪੇਖਾ ਅੱਛਾ ਹੈ ਅੱਛਾ ਹੈ ਕਹਿੰਦੇ ਨੇ ਜੋ ਬਰਦਾਸ਼ਤ ਨਹੀਂ ਹੁੰਦਾ ਨਾਸਵੰਤ ਨਹੀਂ ਹੈ ਵੇਖ ਦਾ ਨਾਸਵੰਤ ਹੈ ਜਿਹੜਾ ਭੇ ਕੋਈ ਵੀ ਹੈ ਨਾਲ ਬੰਦਾ ਹੁੰਦਾ ਇਸ ਕਰਕੇ ਹੀ ਨਾਲ ਬੰਦ ਨਹੀਂ ਉਹਦਾ ਕੋਈ ਪੈਸੇ ਨਹੀਂ ਹੈ ਜੋ ਭੇਗਾ ਸਭ ਨਾਲ ਹੁੰਦਾ ਪੈਸਾ ਵੀ ਹੋਵੇ ਚਾਹੇ ਰਾਗ ਰੰਗ ਜਾਂ ਰੂਪ ਨਰੇਖਾ ਨਾ ਕੋਈ ਰਾਗ ਹੈ ਹੋ ਰਾਗ ਤੇ ਪਰੇ ਹੈ ਪਰਿਆ ਨਾਲ ਹੁੰਦੇ ਵੈਰਾਗੀ ਹੈ ਰਾਗ ਤੇ ਪਰੇ ਹੈ ਅਰ ਰਾਗੀ ਜਿਹੜੇ ਨੇ ਤਾਹ ਰਾਗੀ ਨੂੰ ਰੋਗੀ ਕਹਦਾ ਪਾਸ਼ਾ ਨੇ ਉਹ ਰਾਗੀ ਦਾ ਰੋਗੀ ਹੁੰਦਾ ਜਦ ਬੈਰਾਗੀ ਹੁੰਦਾ ਫਿਰ ਇਹਦੇ ਰੋਗ ਦੂਰ ਹੁੰਦੇ ਰੇ ਰਾਗੀ ਆਪਣੇ ਆਪ ਨੂੰ ਕੀਰਤਨੀਏ ਕਹਿਣ ਲੱਗੇ ਕੀਰਤਨੀਏ ਨਹੀਂ ਹੁੰਦੇ ਰਾਗੀ ਕੀਰਤਨੀਏ ਹੋਰ ਨੇ ਕੀਰਤਨੀਏ ਦੀ ਨਹੀਂ ਰਜਰ ਹੋਰ ਹੈ ਗੁਰਬਾਨੀ ਚ ਇਹਨਾਂ ਨੂੰ ਪਤਾ ਵੀ ਰਾਗੀ ਨੂੰ ਰੋਗੀ ਕਹਿਆ ਕਹਿੰਦਾ ਵੀ ਰਾਗੀ ਨਾ ਖਾਓ ਜਿਹੜਾ ਰਾਗ ਦੇ ਵਿਚਕੋਂ ਦਾ ਰਾਗੀ ਐ ਉਹ ਜਿਹੜਾ ਰਾਗ ਦਾ ਪਾਵਨ ਦਾ ਰਾਗੀ ਐ ਪਾਵਨ ਦੀ ਤੋਂ ਪਰੇ ਵਾਲਾ ਜਿਹੜਾ ਹੈਗਾ ਕੀਰਤਰੀਏ ਕੀਰਤ ਨੇ ਪਾਵਨ ਦਲੀਏ ਕੀਰਤਨਿਆਂ ਦੀ ਮਗਰ ਰਾਗ ਹੁੰਦਾ ਰਾਗੀ ਰਾਗ ਦੇ ਮਗਰ ਹੁੰਦਾ ਰਾਗੀ ਨੇ ਰਾਗ ਦੇ ਵਿਚਰੇਣਾ ਹੁੰਦਾ ਕੀਰਤੀਆਂ ਦੇ ਪਿੱਛੇ ਪਿੱਛੇ ਹੁੰਦਾ ਹੁੰਦਾ ਸਭ ਕੁਝ ਆਪੇ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਪਿੱਛੇ ਪਿੱਛੇ ਆਈਆਂ ਪਿੱਛੇ ਪਿੱਛੇ ਆਈਆਂ ਨੇ ਇਹ ਰਦ ਸਤ ਤਾ ਮਗਰ ਮਗਰੈ ਦਾਸੀ ਅਲਾਮੇ ਕੀ ਨਾਮ ਪ੍ਰਗਟ ਹੁੰਦਾ ਰਦ ਸਤ ਚਲਦੀਆਂ ਰਹੇ ਰਾਗ ਰਾਗਣੀਓ ਇਤਨਾ ਨਾਮ ਕੀ ਦਾਸੀ ਹੈ ਇਹ ਕੀ ਜਾਣ ਵਿਚਾਰੇ ਰੋਗੀ ਗੱਲ ਕੀ ਹੈ ਇਹ ਕੁਤ ਕੋਈ ਕਾਲਜ ਸੀ ਉਥੇ ਕੋਈ ਪੜਾਇਆ ਜਾਂਦਾ ਸੀ ਕਿਨੇ ਰੰਗ ਪੜਾਇਆ ਸੀ ਗੁਰੂ ਅਮਰਦਾਸ ਨੂੰ ਕਿੱਥੇ ਉਹ ਸਿੱਖਿਆ ਸੀ ਇਹਦਾ ਸਾਹ ਆਵੇ ਆ ਜਾਂਦਾ ਪਿੱਛੇ ਪਿੱਛੇ ਉਹ ਨਾਮ ਵਿੱਚ ਸਾਰੀਆਂ ਸਾਰੇ ਗੋਡੇ ਦੇ ਵਿੱਚ ਸਾਰੀਆਂ ਬੰਡੀਆਂ ਇਹ ਦੇ ਵਿੱਚ ਹਰ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ ਬਹੁ ਰੰਗੀ ਬਾਕੀ ਰੰਗ ਤਾਂ ਇਹਦੇ ਵਿੱਚ ਇਹ ਸੂਰਜੀ ਲਾਈਟ ਸਾਰੇ ਲਾਈਟ ਰੰਗ ਦਿੰਦੇ ਨੇ ਸੂਰਜ ਦੇ ਹੀ ਲਾਈਟ ਵਿੱਚ ਸਾਰੇ ਰੰਗ ਨੇ ਨਾਮ ਵਿੱਚ ਸਾਰੇ ਹੀ ਰਾਗ ਸਾਰੇ 골ਡੇ ਸਾਰੇ 골 ਵਿੱਚੇ ਆ ਜਾਂਦੇ ਨੇ ਉਹਨਾਂ ਨੂੰ ਹੀ ਲੋੜ ਹੁੰਦੀ ਰਾਗ ਦੀ ਉਹ ਪਾਵਨ ਨਹੀਂ ਹੁੰਦੇ ਕਿਸੇ ਚੀਜ਼ ਦੇ ਜਿੱਧਰ ਚਲੇ ਅਣਸੱਚ ਹਾਂਜੀ ਰਾਗ ਰੰਗ ਜੈ ਰੂਪਨ ਰೇಖਾ ਨਾ ਕੋਈ ਰਾਗ ਹੈ ਨਾ ਰੰਗ ਹੈ ਰਾਗ ਨ ਰੰਗ ਨ ਰੂਪ ਨ ਰੇਖਣਾ ਰੋਗ ਨ ਸੋਗ ਨ ਭੋਗ ਨ ਪਹਿ ਹੈ ਦੇ ਬਹਿਰ ਸੁਨੇ ਸਬੋ ਸਨ ਗੇ ਬਿਰਖ ਅਗੇ ਅਛਾ ਜਾਨ ਕੋ ਦੇਤ ਅ ਕੋ ਦੇਤ ਜ਼ਮੀਨ ਕੋ ਦੇਤ ਜ਼ਮਾਨੇ ਕੋ ਦਾਹ ਕਾਇਕ ਡੋਲਤ ਹੈ ਤੁਮਰੀ ਪਦਮਾ ਪਦ ਹੈ ਦਸਬਾ ਸ਼ਾਦੀ ਕਿੱਥੇ ਹੋ ਕਿੱਥੇ ਰਾਗੀ ਰਾਗ ਤੇ ਪਰੇ ਰਹੋ ਕੀ ਕੀ ਕਰਦੇ ਨੇ ਰਾਗੀ कोई ਰਾਗ ਗਾਵੈ ਰਾਗੀ ਨਾ ਧੀਬੇ ਧੀਵੋ ਬਾਤ ਕਰ ਰਹੀ ਹਰ ਹਰ ਭੀਜੈ ਰਾਗੀ ਤਾਂ ਭੀਜਦਾ ਹੀ ਨਹੀਂ ਹੁੰਦਾ ਨਾਮ ਨਾ ਕਦੇ ਭੀ नहीं ਸਕਦੇ हर हर ना और ਭੀਜੜ ਕੇ ਵੀ ਨਹੀਂ ਕਿਉਂ ਇਹਨਾਂ ਦੀ ਸੁਰਤ ਇਹ ਆਦਾ ਰਾਗ ਦੇ ਵਿੱਚ ਆਇਆ ਪੈਸਿਆਂ ਚ ਇਹ ਸੰਦਤ ਵਿੱਚ ਮੇਰੇ ਰਾਗ ਦੇ ਕਿੰਨੇ ਖਬਰ ਭਾਵਤ ਨੇ ਮੇਰੇ ਗੁਣ ਤੇ ਕਿੰਨੇ ਖਬਰ ਭਾਵਤ ਰਾਵਣਾ ਜੁੜ ਕੇ ਰਾਗੀ ਪਬਲਿਕ ਵਾਸਤੇ। ਕੀਰਤनियां ਆਪਣੇ ਵਾਸਤੇ। ਕੀਰਤਨਾ ਕੀਰਤੀ ਕਰਦਾ ਹੈ, ਕੀਰਤੀ ਕਰਦਾ ਹੈ। ਕੀਰਤੀ ਕਰਨ ਸਰਲ ਜੀ ਮਨੋਹਰ ਜੋਹਨੂ ਪਾਪ ਬਿਦਾਰ ਨੂੰ ਤੋਂ ਉਹਦਾ ਪਾਪ ਪਾਪਾ ਨੂੰ ਭਜਾਉਣ ਵਾਸਤੇ ਗਾ ਰਿਹਾ। ਕੀਰਤੀ ਕਰ ਲੈ। ਕੀਰਤੀ ਕਰਨ ਸਰਲ ਜੀ ਮਨੋਹਰ ਜੋਹਨੂ ਪਾਪ ਬਿਦਾਰਨੋ ਕੋ ਉਦਰ ਪਾਪ ਜਾਣ ਵਾਸਤੇ ਕਰਦੇ ਇਹ ਲੋਕਾਂ ਨੂੰ ਖੋਜ ਕਰਨ ਵਾਸਤੇ ਕਰਦੇ ਦੋਹਾਂ ਦਾ ਟਾਰਗੇਟ ਹੈ ਲੱਗ ਹੈ ਇਹ ਕੀ ਜਾਣ ਲੱਗੀ ਗੱਲ ਕੀ ਹੈ ਇਹਨਾਂ ਨੂੰ ਕੀ ਪਤਾ ਕੀ ਗੱਲ ਹੈ ਉਹ ਗੱਲ ਹੋਰ ਹੈ ਗੱਲ ਹੋਰ ਉਹ ਮਾਇਆ ਨਾਲ ਜੁੜ ਕੇ ਗੱਲ ਦੇ ਉਹ ਨਾਮ ਨਾਲ ਜੁੜ ਕੇ ਗੱਲ ਦੇ ਚੂਠਣਾ ਜੁੜ ਕੇ ਗਾਉਂਦੇ ਨੇ ਤਪਲੇ ਨਾਲ ਜੁੜ ਕੇ ਗਾਉਂਦੇ ਨੇ ਉਹ ਨਾਮ ਨਾਲ ਜੁੜ ਕੇ ਗਾਉਂਦੇ ਨੇ ਉਹ ਬਲਾਏ ਬੋਲਦੇ ਨੇ ਇਹਨਾਂ ਬੁਲਾਉਣ ਵਾਲੇ ਸਾਜ ਨੇ ਸਹੀ ਰਾਗ ਰੰਗ ਜਹ ਰੂਪ ਨਰੇਖਾ ਰਾਗ ਰੰਗ ਜਹ ਰੂਪ ਨਾ ਰੂਪ ਨਰੇਖ ਨਾ ਰਾਗ ਨਾ ਰੰਗ ਸਭ ਤੋਂ ਪਰੇ ਹੈ ਤਾਂ ਬਕੀਤੰਦਰਵਾਰਾ ਲੈ ਕੀ ਕਰਦੇ ਨੇ ਕੀ ਬਣੂਗਾ ਉਹ ਤਾਂ ਇਹ ਤਾਂ ਪਰੇ ਹੈ ਪਰੇ ਆ ਸ਼ਬਦ ਵਿਚਾਰ ਵਿੱਚ ਐ ਉਹ ਸਵਾਲ ਐ ਫਿਰ ਕਾਦੇ ਵਿੱਚ ਐ ਗੁਰਬਾਣੀ ਦੇ ਵਿਚਾਰ ਵਿੱਚ ਐ ਉਹ ਇਹਦੇ ਵਿੱਚ ਕਿਤੇ ਨਹੀਂ ਹੈ ਕੀਰਤਨ ਦੇ ਵਿੱਚ ਆ ਜੋ ਕੁਝ ਹੋ ਰਿਹਾ ਇਹਦੇ ਵਿੱਚ ਨਹੀਂ ਹੈ ਉਹ ਸ਼ਬਦ ਵਿਚਾਰ ਵਿੱਚ ਐ ਗੁਰੂ ਵਿਚਾਰੇ ਗਿਆਨੀ ਹੋਏ ਗੁਣ ਮਹਿ ਗਿਆਨ ਪ੍ਰਾਪਤ ਹੋਏ ਗੁਰਾਂ ਦੀ ਗੁਰਬਾਣੀ ਦੀ ਗੁਰਗਾਇਨਾ ਗੁਰਬਾਣੀ ਇਹਦੀ ਵਿਚਾਰ ਵਿੱਚ ਉਹ ਗਿਆਨ ਪ੍ਰਾਪਤ ਹੋਣਾ ਜਿਹਨੂੰ ਕਹਦੇ ਸਭ ਤੋਂ ਬਾਖਣ ਖਾਇਆ ਛਾਚ ਪੀਏ ਸਤ ਸਰ ਬਰਨ ਉਹ ਗਿਆਨ ਪ੍ਰਾਪਤੁਪੇ ਜਿਹੜਾ ਗੁਰੂ ਐ ਗਿਆਨ ਗੁਰੂ ਆਤਮ ਰੂਪ ਦੇਸੋ ਬਰਨ ਚਿਹਨ ਸਭ ਹੁੰਦੇ ਨਿਆਰਾ ਬਰਨ ਚਿਹਨ ਸਭ ਹੁੰਦੇ ਨਿਆਰਾ ਬਰਨ ਚਾਰ ਵੰਡ ਬਣਾਏ ਨੇ ਜਿਹਦੂਆਂ ਵੰਡ ਨਾ ਮਤਲਬ ਇਹ ਉੱਥੇ ਕੋਈ ਚਿੰਦ ਅ ਸਾਡੇ ਦੇ ਜਿਹੜੇ ਉਪਾਜ ਕਾਰਨ ਕਿਸੇ ਦਾ ਕੋਈ ਜਿੱਨਕ ਇਹ ਸਾਰਿਆਂ ਤੇ ਅਲੱਗ ਆਇਆ ਸਭ ਚੀਜ਼ ਸਭੂ ਦਾਰੂ ਬਜਾ ਦੇ ਜਾਂਦਾ ਨਾ ਤਾਰੂ ਸੱਚ ਫੇਰ ਉਹ ਬੰਦਿਸ਼ ਧਰਮਾਂ ਦੀ ਨਾ ਵੇਖ ਲਈਂ ਕਹੋ ਨਾ ਵੇਖ ਖੁਦ ਕਰ ਲੈ ਅਲੈਖ ਬੀਜ ਬੀਜੂ